ਸਾਧ ਕੇ ਸੰਗੀ ਨ ਕਬੂ ਤਾਵੇ ਸਾਧ ਕੇ ਸੰਗੀ ਸਦਾ ਸੁਖ ਪਾਵੇ ਸਾਧ ਕਾ ਸੰਗੀ ਸਦਾ ਨ ਕਤੂ ਤੂ ਪਾਵੇ ਕਬੂ ਕਤੋਂ ਨ ਕਬੂ ਕਬੂ ਤਾਵੇ ਕਤੂ ਤਾਵੇ ਤਾਂ ਦਗਾਉਣਾ ਤਾਂ ਦਗਾਉਣਾ ਮੈਂ ਨਹੀਂ ਦਗਾ ਜਦੋਂ ਆਪਣੇ ਮਨ ਨੂੰ ਸੌਂਦਾ ਕਹਿੰਦਾ ਫੇਰ ਇਹ ਤਾਂ ਹੁੰਦਾ ਉਹ ਕੋਈ ਤਾਂ ਹੁੰਦਾ ਉਹਦਾ ਹੀ ਮਨ ਭੱਜਦਾ ਸੌਂਦਾ ਹੋ ਆਈਦਾ ਬਹਨਾ ਦੋ ਥੀ ਜਗ੍ਹਾ ਇੱਕ ਕਰਨ ਲੈ ਹੁੰਦਾ ਕਹਿੰਦਾ ਉਹਨੂੰ ਦੂਜਾ ਯਾਤਰੀ ਕਿ ਨਾਲ ਜਾਂ ਮਾਂ ਸੁਰਤ ਤਾਂ ਹੁੰਦੀ ਹੈ ਤੇ ਤਾਂ ਹੈ ਇਹਦਾ ਬੁੱਧਾ ਅੱਧਾ ਲੈਦਾ ਉਹ ਵੀ ਰਮੇ ਕੋਈ ਦੋ ਮਾਰਦੀ ਨੇ ਦੋ ਜੱਤਰੀ ਨੇ ਜੇ ਮਾਨ ਕਾਇਨਾ ਦੂਰੇ ਦਾ ਨਾਮ ਤੇ ਦਾ ਨਾਮ ਵੀ ਮਨੇ ਤੇ ਢਾਲ ਹੋਈ ਢਾਲ ਢਾਲ ਕਰ ਲੀਏ ਆਪਾਂ ਜੇ ਆਪਾਂ ਪੋਤਲੀ ਦਾ ਇੱਕ ਢਾਲ ਨੂੰ ਚਨੇ ਦੀ ਢਾਲ ਕਹਾਂਗੇ ਨਾਲ ਦੀ ਚਨੇ ਦੀ ਹੋਈ ਹੈ ਕਿ ਨਾਲ ਦੀ ਆਲੂਆਂ ਦੀ ਢਾਲ ਹੈ ਇਹ ਆਪੋ ਉਠਾਂ ਦੀ ਢਾਲ ਹੈ ਥੀਮ ਨਾਉਣੇ ਦਵਾਉਂਦੇ ਆ ਕੋਹੀ ਨੋਰ ਦਾ ਨਾਮ ਮਾਨਾ ਅੱਜ ਦਾ ਨੋ ਮਨੇ ਦਾ ਨਾਮ ਮਨੇ ਹੋਊਗਾ ਜਿਹਦੇ ਦਾ ਨੋ ਚੱਤਾ ਦੂਜੇ ਦਾ ਨੋ ਬਿਚਤੂ ਉਹ ਜਾਦਾ ਸੀ ਚੱਤਰ ਮਾਨ ਕਹਣੇ ਉਹਦਾ ਇਹ ਹੁੰਦਾ ਆ ਜਿੱਤੇ ਜਿਹੜਾ ਮਾਇਆ ਦੇ ਵਿਚਲਾ ਗਿਆ ਹੈ ਜਿਹੜਾ ਜਿਹੜਾ ਧਨ ਰੂਪ ਹੋਇਆ ਉਹ ਬਣੇ ਜਿਹੜਾ ਜੋਤ ਰੂਪਾ ਹੈ ਇਹ ਤਤ ਰੂਪਾ ਉਹ ਚੱਤਾ ਦੋ ਇਸੇ ਦੇ ਨੋ ਅੱਡ ਜਿਹੜੀ ਉਹਦੀ ਸ਼ਕਤੀ ਹੈ ਜਿਹੜੀ ਇੱਛਾ ਸ਼ਕਤੀ ਕਿਹਾ ਹੁੰਦੀ ਹਾਲੇ ਨੂੰ ਚਲਾਉਣ ਵਾਲੀ ਪੋਜ਼ਿਟਿਵ ਜਿੱਦੇ ਨਾਲ ਸਾਹ ਆ ਸਕਦਾ ਸਰੀਰ ਚੱਲਦਾ ਉਹ ਚੰਗਾ ਉਹ ਹਰਦੀ ਦੀ ਉਹ ਨਹੀਂ ਰਹੀ ਉਹਦਾ ਜਿੱਤ ਮੋ ਤੋਂ ਤੇ ਆਉਂਦੀ ਹੁਣ ਜਵਰਨ ਜਾਇ ਉਹਦਾ ਖੁੱਜੀ ਉਹਦੇ ਉਪਰ ਲੈ ਸਾਰੀ ਜ਼ਿੰਦਗੀ ਉਹ ਭੁੱਲ ਰਹਿਣ ਉਹਦੇ ਇੱਕ ਸਟੱਟ ਵਾਸਤੇ ਵੀ ਜੁੱਲਦਾ ਕਿਹੜਾ ਬਲਾਇਆ ਸਾਰੇ ਹੁਣ ਰਾਤੀ ਜੇ ਨੂੰ ਤੜਕਾਉਣਾ ਨਹੀਂ ਭੁੱਲਦਾ ਹੋਰ ਕੁਝ ਭੁੱਲ ਨਹੀਂ ਜੇ ਭੁੱਲ ਗਿਆ ਤੇਰੀ ਨਾਲ ਹੀ ਭੁੱਲ ਗਿਆ ਇਹਦਾ ਹੀ ਰਾਮ ਮਾਮਲਾ ਫਿਰ ਤਾਂ ਲੰਮੇ ਗੋੜ ਤਖਾਰ ਹੋ ਜੂਗਾ ਕਬ ਉਹ ਹੀ ਸੋਣਾ ਹੀ ਹੈ ਇਸ ਕਰਕੇ ਅੱਧੇ ਦਾ ਜਮਾਨਾ ਤਦ ਉਹਦੇ ਦਾ ਨਾ ਵੀ ਮੰਨੇ ਕਾ ਤੂੰ ਤਾਵਾ ਅੱਧਾ ਹੀ ਟੌਣਾ ਕਰਦੇ ਕਾ ਤੂੰ ਤਾਵਾ ਕਾ ਤੂੰ ਤਾਵਾ 2 ਰਾਤੀਆ ਆਪ ਤਾਂ ਉੱਥੇ ਹੀ ਹੈ ਸਿਆਣ ਉਹਦਾ ਜਾਂਦਾ ਬੜਦਾ ਉਹਦਾ ਯੋਚ ਸਿਆਣਾ ਉਹ ਹੀ ਤਾਂ ਹੋਗਾ ਇੱਥੇ ਬੈਠਾ ਕੋਈ ਗੱਲ ਕਰਦਾ ਕਲਾਸ ਚ ਬੱਚਾ ਬੈਠਾ ਟੀਚਰ ਬੋਲਦਾ ਉਹਦਾ ਤਾਂ ਹਾਂ ਗਿਆ ਬਾਹਰ ਟੀਚਰ ਨੂੰ ਤਾਂ ਟੁੱਟ ਗਿਆ ਨਾ ਤਾਂ ਸਰੀਰ ਕਰ ਕਿਉਂ ਉੱਥੇ ਬੈਠਾ ਅੱਡਾ ਉੱਥੇ ਬੈਠਾ ਹਾਰਟ ਚ ਚਲਾਉਣ ਵਾਲਾ ਉੱਥੇ ਬੈਠਾ ਹਾਰਡ ਤਾਂ ਉਥੇ ਸਹੀ ਰੋਥੀ ਹੈ ਹਾਰ ਚੱਲਦਾ ਵੀ ਹੈ ਉਹ ਚਲਾਉਣ ਵਾਲਾ ਉੱਥੇ ਬੈਠਾ ਸੋਲਰ ਵਾਲਾ ਉੱਥੇ ਉਹਦੇ ਫੰਕਸ਼ਨ ਚੱਲ ਰਹੇ ਉਹਦੇ ਫੰਕਸ਼ਨ ਚੱਲਦੇ ਆ ਤਾਂ ਉੱਥੇ ਬੈਠਾ ਇਸ ਤਰੀਕੇ ਨਾਲ ਆਡਾ ਨਹੀਂ ਹੋ ਸਕਦਾ ਇਹਦਾ ਬਾਹਾਂ ਲੰਬੀ ਕਰ ਲੈਂਦਾ ਨਦਰ ਲੰਬੀ ਇਹ ਇੱਕ ਹੱਥ ਹੈ ਹੋ ਕਬਰ ਇਹਦਾ ਜਿਹੜਾ ਹੁਕਮ ਹੈ ਨਾ ਮਨ ਕੋ ਹੁਕਮ ਉਹ ਵੀ ਹੱਥ ਬੋਲ ਬੈਦਾ। ਤੇਰਾ ਹੱਥੇ ਜਾਂਦਾ ਉਹ ਤੇ ਪਰਮੇਸ਼ਰ ਸਾਹਿਬ ਜਾਂ ਪਰਮਾਸ਼ਾਹਲਾ ਇਹ ਤਾਂ ਲੰਬਾ ਹਾਥ। ਉਹਦਾ ਹੱਥ ਬਾਹਰ ਬਹੁਤ ਦਾ। ਰਜਨਾ ਤੋਂ ਵੀ ਬਾਹਰ। ਸੇਫ ਤੋਂ ਪਰੇ ਤੱਕ ਪਹੁੰਚਾ। ਕਿਉਂ ਐਨੂੰ ਪਰੇ ਤੱਕ ਪਹੁੰਚਾਣਾ ਜਾਂ ਕੇ ਫਿਰ ਉੱਚਾ। ਇਹਦਾ ਹੱਥੋਂ ਤੱਕ ਤੱਕ ਬੋਲਦੇ ਜਿੱਥੇ ਤੱਕ ਕੱਦਲ ਗਿਆਨ ਸਾਡਾ ਹੱਥੋਂ ਉੱਥੇ ਤੱਕ ਜਾਂਦਾ ਸੁਰਤ ਜਿੱਥੇ ਤੱਕ ਦਾ ਗਿਆਨ ਜਿੱਥੇ ਤੱਕ ਦਾ ਗਿਆਨ ਦੀ ਉੱਥੇ ਦੇ ਦੋ ਜਿਹੜੇ ਸਮਾਗੀ ਲਾਉਂਦੇ ਨੇ ਮੈਡੀਟੇਸ਼ਨ ਵਾਲੇ ਤੇਰੇ ਜੋ ਬੀਜੋ ਬੀਜੋ ਸੋਚਦੇ ਨੇ ਤੇਰੇ ਜੋ ਮੈਡੀਟੇਸ਼ਨ ਦਾ ਦਰਦ ਸੁਖੀ ਜਾਂਦਾ ਜਦੋਂ ਸੁਪਨਾ ਦੇਖੀਦਾ ਰਾਤ ਨੂੰ ਮੈਡੀਟੇਸ਼ਨ ਹੁੰਦਾ ਉਹ ਡ੍ਰੀਮ ਦੇਖ ਲੈਂਦਾ ਨਰਿਆ ਫਾਟ ਦੇਖਣਾਈ ਡ੍ਰੀਮ ਦੇਖ ਲੈਂਦਾ ਹੈਡ ਹੋਲ ਡ੍ਰੀਮ ਸੱਚ ਕੁਝ ਨਹੀਂ ਹੁੰਦਾ ਉਸੇ ਸਭ ਆਇਆ ਮਨ ਦੀ ਕਲਪਨਾ ਆਇਆ ਇਹ ਸਰੀਰ ਸੱਚ ਹੈ ਪਰ ਇਹ ਮਨ ਦੀ ਕਲਪਨਾ ਹੈ ਸਰੀਰ ਦਾ ਸਾਰਾ ਸੁੱਤਾ ਇਹ ਵੀ ਕਲਪਨਾ ਇਹ ਪਰ ਦੀ ਸਿਰਫ ਕਲਪਨਾ ਹੋਰ ਕੁਝ ਨਹੀਂ ਪਰ ਉਹ ਸੱਚ ਹੈ ਜਿਹੜਾ ਸੱਚਾ ਚਿਤਵ ਦਾ ਉਹ ਸੱਚ ਉਹ 베ਰਾ ਚਿਤਵਿਆ ਨਾ ਕਰ ਆਪਣਾ ਚਿਤਵਿਆ ਹਰ ਕਰਾ ਜੋ 베ਰੇ ਨਾ ਹੋਵੇ ਆਪਣਾ ਚਿਤਵਿਆ ਕਰੇ ਮੈਂ ਵੀ ਚਿਤ ਨਾ ਹਰ ਵੀ ਚਿਤਵਦਾ ਪਰਮੇਸ਼ਰ ਵੀ ਚਿਤਵਦਾ ਚਿਤ ਨਹੀਂ ਕਰਦਾ ਥੋੜਾ ਜਿਹਾ ਕਲਪਨਾਲ ਚਿਤ ਨੂੰ ਵਿੱਚ ਫਰਕ ਆਪਾਂ ਇਹ ਵੀ ਦੇਖਿਆ ਜੀ ਤੇ ਕਲਪਨਾ ਹੁੰਦੀ ਹੈ ਉਹ ਹੁੰਦੀ ਹੈ ਲੋਭ ਬਸ ਮਾਤਬਸ ਸਾਡੀ ਜਿਤਬਦੀ ਕਲਪਨਾ ਹੁੰਦੀ ਜੈਸ ਕਰਕੇ ਸਾਡੀ ਜਿਤਬਦੀ ਸਵਾਰ ਤੋਂ ਆਦਮੀ ਅੰਮ੍ਰਿਤ ਜਿਲੇ ਹਾਂ ਵਿੱਚ ਮੱਤ ਵੀ ਬਣਾਈ ਹੈ ਕੋਈ ਤਨ ਵੀ ਕ੍ਰੀਏਟ ਕੀਤਾ ਉਹ ਵੀ ਸਵਾਰਥ ਹੁੰਦਾ ਇਕ ਘਟਾਰਾ ਡੇਰੀ ਬਣਾਈ ਜ ਆਪਣੇ ਸੰਤਤ ਪਾੜੀ ਜ ਆਪਣੇ ਚੇਲੇ ਬਣਾਏ ਫਾਸਲ ਸਾਰੀਆਂ ਬਤਾਂ ਨੇ ਰਾਜਦਾਨ ਕੀ ਕਨਸੋਰਸ ਸੀ ਸਾਰੇ ਜਿਹਨੇ ਧਰਮ ਨੇ ਜਿਹੜੇ ਰਾਜ ਨਾਲ ਅਟੈਚ ਹੋ ਗਏ ਸੋ ਅਸੀ ਤੇ ਰਾਜ ਹੋਇਆ ਜਿਹੜਾ ਰਾਜ ਨਾਲ ਅਟੈਚ ਨਹੀਂ ਹੁੰਦਾ ਰਾਜਾ thorium ਉੱਧਾ ਸਭਾ ਰਾਜਾ thorium ਉੱਧਾ ਪਰਮਾਰਥ ਰਾਜੇ ਨੂੰ ਸਿੱਖਿਆ ਤਾਂ ਦੰਦਾ ਰਹਿੰਦਾ ਵੀ ਭਾਈ ਐਂ ਕਰ ਚੱਪਦਾ ਕਰ ਰਾਜੇ ਜੂੜੀ ਬੇਉਕੀ ਰਾਜਾ ਨੇ ਜੂੜੀ ਛੱਡ ਕੇ ਆਇਆ ਤੂੰ ਦਰਗਾਹ ਚੋਂ ਮੈਂ ਸਾਫ਼ ਕਰੂੰਗਾ ਤਾਂ ਤੇ ਰਾਜ ਮਿਲਿਆ ਉਹ ਕਰ ਜੇ ਨਹੀਂ ਸਾਫ਼ ਕਰਦਾ ਫਿਰ ਅਜੇ ਸ਼ੀਲ پکڑਦਾ ਪੁੱਤ ਉਹ ਕੰਮ ਨਹੀਂ ਕਰਦਾ ਜਿਹੜਾ ਕਰਕੇ ਆਇਆ ਫਿਰ ਤੋਂ ਲੋਕ ਮਾਰੂ ਉਦਤੀਆਂ ਨੇ ਤੇਰੀ ਉਹ ਬਿਲਕੁਲ ਮਾਰੂ ਗਰੀ ਮਾਰੂ ਉਦਤੀਆਂ ਨੇ ਹੱਦ ਤੱਕ ਬਾੜੇ ਨੂੰ ਮਾਰਦਾ ਸੀ ਵੀ ਭਇਆ ਭਾਜਦਾ ਕਮਜ਼ੋਰ ਬਿਝੇ ਰਹਿ ਜਾਂਦਾ ਦੰਦਰ ਨੂੰ ਉਭਾਲ ਲੈਂਦਾ ਦੂਏ ਭਜ ਜਾਂਦਾ ਤਗੜੇ ਆਜੇ ਛੀ ਉਹ ਕਦਮ ਘੁੱਟੇ ਉਹ ਨਾ ਇਹੇ ਉਹਦਾ ਵਾਅਦਾ ਉਹਦਾ ਖਾ ਲੈਂਦਾ ਬਿਠਾ विचित्रायन कहिए दादा वो पंडित है नाराजना ना राज नाटकराज अपना सचातार घूमेश्वर हां आपने आप राजकाम काम और था जो भर्ती कोई कहियावे सुनत दो राजे आए ना अपने को दो इद्दत आ रहा रहो पारसना दोसवार सीधी दोसवाती अवतार और राजा ने आना और राजा नहीं कर देता अवतार और राजा के फर्क राजा अपने वास्ते राज भी राजा राज दिखाता से बगैर जेड़ा राज आ बनके शक्ति पूरी हासिल करके गरीब वी रचा करे वो सेवा ही करता कोई है कोई गरीब ते कोई जेड़ा ताकतवर है फुला ना कर ਉਹਨੂੰ ਪ੍ਰੈਸ਼ਰ ਨਾ ਕਰਿਓ ਤਾਂਕਾ ਨਾ ਕਰੇ ਉਹ ਉੱਠ ਨਾ ਜਾਵੇ ਉਹ ਤੇ ਉਹਨੂੰ ਡਾਂਟਾਂ ਮੈਂ ਮੈਂ ਉਹ ਤੇ ਡਾਂ ਲਖਾਂ ਡਾਂਟ ਰਖਾਂ ਉਹਦਾ ਸੇਵਾਇਕਾ ਦੇ ਫਿਰ ਵੀ ਰਾਜੇ ਤੇ ਕਹਿੰਦੇ ਮੁਆਫੇ ਕਰ ਮੁਆਫੇ ਕਰ ਲੈ ਆਪ ਦਾ ਕੋਈ ਦਰਦ ਨਹੀਂ ਹੋਰ ਵੀ ਕਿਸੇ ਦਾ ਨਾ ਹੋਵੇ ਜਿਹੜਾ ਰਾਜਾ ਹੁੰਦਾ ਜਿਹੜਾ ਅਵਤਾਰ ਹੁੰਦਾ ਵੱਡੇ ਵੱਡੇ ਅਹਲਕਾਰਾਂ ਦੇ ਖਿਲਾਫ ਹੁੰਦਾ ਸੁਰਖਾਤ ਤੇ ਪ੍ਰਹਾਰ ਹੁੰਦਾ ਵੱਡਾ ਵੱਡਾ ਜਿਹੜਾ ਉਹ ਹਕਾਰੀਓ ਜੇ ਉਹਦੇ ਅਹਲਕਾਰ ਹੋਵੇ ਵੀ ਅਹਲਕਾਰ ਫਰਫਰ ਕੰਮ ਦੇ ਹੁੰਦੇ ਨੇ ਵਿੱਚ ਗਲਤੀ ਹੋਗੀ ਸਭ ਤੇ ਪੀੜ ਦੂਗਾ ਕੋਈ ਉਸਨੂੰ ਫਰਾਨੀ ਨਹੀਂ ਹੈ ਰਾਜ ਕੋਈ ਨਹੀਂ ਭੈ ਦੇ ਬਿਨਾਂ ਨਹੀਂ ਹੁੰਦਾ ਕੋਈ ਜੇ ਪੈ ਹੂ ਤਾਂ ਹੈ ਜਿਹਨੂੰ ਤਾਕਤ ਦੇਣਾ ਕਾਰਨ ਹੋਇਆ ਜਦਾਂ ਉਹ ਉਹ ਰਚਨਾ ਖੜੀ ਰੋੜ ਹੈ ਜੀ ਦੇਖੋ ਜਿਆਦਾ ਤਾਕਤ ਆ ਥੋੜੀ ਦਾ ਅਸਰ ਨਾਲ ਵਿਚਾਰ ਆ ਬੈਠਦਾ ਹੁੰਦਾ ਉਹ ਪਹਿਲੇ ਕਰਦਾ ਹੁੰਦਾ ਇਥੇ ਡੌਣ ਦੇ ਨਾਲ ਥੋੜੀ ਦਾ ਨੂੰ ਬੜੀ ਦਾ ਅਸਰ ਹੁੰਦਾ ਕੋਈ ਡਰੇ ਨਹੀਂ ਰਾਜਾ ਦਾ ਹੁੰਦਾ ਇਸ ਸਵਾਰਥ ਦਾ ਰਾਜ ਇਹ ਜਾ ਹੁੰਦਾ ਬੜੀ ਤਾਕਤ ਵਾਲੇ ਹੰਕਾਰੀ ਗਰੀਬੀ ਦੁਨੀਆ ਇਹ ਹਹਾਕਾਰ ਫਿਰ ਹੁੰਦਾ ਉਹਨਾਂ ਦੇ ਹਹਾਕਾਰ ਉਹਦੀ ਜਿਤਨੀ ਉਹ ਸੁਪਣਾ ਨਹੀਂ کہہ ਸਕਦੇ ਜਿਹੜਾ ਸੰਸਾਰ ਉਹਦੀ ਜਿਤ ਵੀ ਹੋਈ ਜੂੜ ਆਪ ਸਤ ਕਿਹਾ ਸਭ ਸਤ ਕਿਉਂਕਿ ਆਪ ਸੱਚਾ ਹੋ ਆਪ ਹੋਂਦ ਵਾਲਾ ਹੈ ਹੋ ਸਤ ਦਾ ਮਤਲਬ ਹੋਣਾ ਜਿੱਦਿ ਸਦਾ ਹੋਦ ਰਹਿੰਦੀ ਹੈ ਉਹ ਸੱਚ ਹੈ ਹੋਂਦ ਵਾਲਾ ਹੈ ਉਹ ਕਦੇ ਵੀ ਹੋਂਦ ਹੋਦੀ ਬਿੜਦੀ ਨਹੀਂ ਹੱਸਦੀ ਦੀ ਕਦੇ ਵੀ ਹਸਦੀ ਬਿੜਦੀ ਨਹੀਂ ਉਹ ਸੱਚ ਹੈ ਤੇ ਫਿਰ ਜੋ ਉਹਨੇ ਕੀਤਾ ਉਹ ਵੀ ਹਸਦੀ ਹੈ ਤੱਤੀ ਹੈ ਆ ਜੇ ਤਰਤੀ ਨੂੰ ਕਹ ਰਹੇ ਹਾਂ ਜੀ ਸਾਨੂੰ ਸੁਪਨਾ ਆਉਂਦਾ ਤਾਂ ਸੱਚੀ ਉਹ ਸੁਪਨੇ ਜਿਉਂ ਸੰਸਾਰ ਕੈ ਸੁਪਨਾ ਨਹੀਂ ਹੈ ਸੁਪਨੇ ਜਿਉਂ ਕੇ ਜਿਵੇਂ ਆਪਾਂ ਤੁ ਸੁਪਨਾ ਹੁੰਦਾ ਉਹ ਵੀ ਮੰਨ ਲਓ ਸੁਪਨਾ ਛੋੜ ਹੀ ਜਾਏ ਸ ਆ ਸਾਧਕੇ ਸੰਗੀਨਾ ਕਲਹੁ ਹਉ ਆਵ ਸਾਧਕੇ ਸੰਗੀ ਸਦਾ ਸੁਖ ਭਾਵ ਸਾਧਕੇ ਸੰਗੀਨਾ ਕਹੂ ਹਉ ਤਾਵ ਜਿਆਦਾ ਆਪਣਾ ਮਨ ਹਾਲ ਲੈਂਦਾ ਫਿਰ ਜੀ ਪੈਦਾ ਫਿਰ ਜੀਵ ਆਤਮਾ ਆ ਕੇ ਤੇ ਪੈਦੀ ਉਹ ਫਿਰ ਬੁੱਧੀ ਪੈਦੀ ਨਰਤੀ ਦੀ ਭਜਨ ਅਠੇ ਤਿਕਤੋਂ ਆਜੋ ਮਨੇ ਭਜਾਉਂਦਾ ਹੋਰ ਕੋਣ ਭਜਾਉਂਦਾ ਜੇ ਮਨ ਨਹੀਂ ਵਾਦਾ ਬੈਠਾ ਕੀਨੇ ਮੈਂ ਸਵਾਸ ਵਾਸਤੇ ਮਨ ਪਾਇਦਾ ਸਵਾਲ ਥੀਂ ਦੀ ਰਿਆ ਜਾਂ ਪਰਮਾਤਿ ਦੀ ਰਿਆ ਨਾ ਫਿਰ ਤਾਂ ਟਿਕ ਜਾਂਦਾ ਥਾਨਾ ਥਾਨਾ ਥਾਨਾ ਪਰਮਾਤਿ ਵਾਸਤੇ ਤੇ ਥਾਂ ਹੁਤੇ ਪਰਮਾਤਿ ਵਾਸਤੇ ਜਿੱਦੇ ਨਾਲ ਤਕੌਣ ਨਾ ਥਾਨੇ ਜਾਂਦਾ ਜਿੱਦਾਂ ਜਾਂਦੀ ਹੁੰਦੀ ਥਾਨੇ ਜਾਂਦਾ ਫਰਿਆਦ ਕਰਦਾ ਜਾਂਦਾ ਕੋਮ ਦੇ ਨੇ ਤੁਡੀ ਰੱਖਿਆ ਕਰਦੇ ਨੇ ਪਰ ਪਰਮਾਤਮਾ ਇਸ ਕਰਕੇ ਗੁਡਵਾਰੀ ਮੇਰੀ ਕਹਿੰਦਾ ਹੋ ਕਬੀਰ ਤੇ ਗੁਡਵਾਰੀ ਗੁਡਵਾਲੀ ਛਣਦਾਰੀ ਹੈ ਵੀ ਇਹੀ ਤਰੀਕਾ ਆ ਪਰਮਾਤਮਾ ਦਾ ਜੇ ਇਹ ਕਰਨਾ ਗੁਰੂ ਉਹ ਜੇ ਉਹ ਤਾਂ ਚਾਹੁੰਦਾ ਨਾ ਕੋਈ ਕੇ ਸਾਡੇ ਅਬੀ ਨਾ ਸਾਡੇ ਚਾਹੁੰਦਾ ਉਹ ਇਹ ਜਾਣਦੇ ਜਿਹੜੇ ਪਰੇਖਾ ਜੇ ਜਿਆਦਾ ਅਪਦਰ ਬਹੁਤ ਸਾਰਾ ਥਾਣਾ ਪਰੇਖਾ ਮੁਜੱਦਰ ਰਾਦਰ ਚੈਨ ਨਹੀਂ ਹੁੰਨ ਉਹਦਾ ਕਹਿਣੇ ਬਾਬਾ ਸਾਰੇ RAM ਨਾਲ ਕੋਈ ਕਿਧੋ ਨਾ ਸਾਡੂ ਅਫਸਰ ਕੋਈ ਕਹੇ ਸਾਰੀ ਦੁਨੀਆ ਵਧੀਆ ਜੀਵਨ ਜਿਵੇਂ ਸਾਡੇ ਕੋਲ ਸ਼ਾਪਲੇ ਨਹੀਂ ਦੁੱਠੀਏ ਤਨ ਖਾ ਲੈ ਲੈ ਕਰੀਏ ਮौज ਕਰੀਏ ਕੋਈ ਕੇਸ ਹੈ ਨਾ ਉਹ ਕਾ ਚੰਗਾ ਨੇ ਵੀ ਉੱਥੇ ਵੀ ਚੋਰੀ ਹੋ ਜਾ ਉੱਧਰ ਵੀ ਕੁਛ ਹੋ ਜਾ ਉਹਨਾਂ ਨੂੰ ਜਾਣ ਖਾਤਰ ਹੈ ਆਫਸਰ ਦੁਨੀਆ ਬਦਲ ਨਹੀਂ ਕਰਦੀ ਹੈ ਉਹਨਾਂ ਦੀ ਇਹ ਅੰਸਰ ਜਦੋਂ ਮੰਨ ਨਹੀਂ ਨਾ ਉਹ ਫੰਦਰਮ ਕਰਦਾ ਉਹਦਾ ਮੌਤ ਚ ਉਹਦਾ ਸਮਾਂ ਜਾਂ ਕੋਈ ਭੋਲਾ ਨਹੀਂ ਉੱਠਦਾ ਸ਼ਿਕਾਇਤੇ ਨਹੀਂ ਹੁੰਦੀ ਬੰਦੀ ਕੋਈ ਅਕਲ ਖੋਲ ਉਹਦਾ ਕਹਿੰਦੀ ਹੈ ਝੰਡਾ ਖੋਲ ਉਹ ਨਾ ਉਹ ਨਾ ਫਲ ਸ਼ਾਂਤੀ ਆ ਥਾਣੇ ਆ ਨੂੰ ਜਦੋਂ ਹੋ ਗਿਆ ਵੇ ਇੱਦਾਂ ਦੀ ਗੜਬੜ ਹੋ ਗਈ ਉਧਰ ਉਧਰ ਤੱਕ ਸ਼ਾਂਤੀ ਬਹਿ ਜਾਂਦੀ ਹੈ ਥਾਣੇ ਵਾਲਿਆਂ ਦਾ ਕਿ ਇਦਾਂ ਦੀ ਸ਼ਾਂਤੀ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ ਅ디 ਅ디 ਕਾ ਚੌਣ ਹੈ ਵਿਵਾਨ ਕੋ ਜੇ ਸਾਡਾ ਚੌਤਾ ਨਹੀਂ ਆਪਾਂ ਹਰ ਇੱਕ ਜਹਾਂ ਦਾ ਬੰਦੇ ਕੰਟਰੋਲ ਕਰੀਏ ਫਿਰ ਹੁੰਦਾ ਨਹੀਂ ਕਿਉਂ ਹੋ ਜਾਉਣਾ ਯਾਰ ਬੜੀ ਆ ਉਹਨਾਂ ਦੀ ਜਿਹਨਾਂ ਦਾ ਕੋਈ ਕੰਟਰੋਲ ਹੈ ਸਾਡੀਆਂ ਕਈ ਮਜਬੂਰੀਆਂ ਨੇ ਸਮਾਜ ਹੈ ਰਿਸ਼ਤੇਦਾਰ ਨੇ ਜਾਣਦੇ ਵੀ ਸਾਰੇ ਨੇ ਜਾਣਦੇ ਹੋਏ ਵੀ ਬੜੇ ਬੜੇ ਕੰਮ ਕਰਦੇ ਪਤਾ ਵੀ ਘੱਟ ਨਜਾਇਜ਼ ਕਰਨਾ ਪੈਂਦਾ ਪੈਸਾ ਵੀ ਕਿਥੋਂ ਕਿਧੋਂ ਆਉਗਾ ਹੀ ਕਿਵੇਂ ਵੀ ਆਵੇ ਹੁੰਦਾ ਹੀ ਹੈ ਤੱਗ ਵੀ ਹੁੰਦੇ ਨੇ ਪਰ ਫੇਰ ਵੀ ਜਾਣਦੇ ਹੋਏ ਗਲਤੀ ਕਰਨਾ ਪੈਂਦਾ ਕਿਉਂ ਮਜਬੂਰ ਹੈ ਸਮਾਜ ਤੋਂ ਇੱਕ ਸਮਾਜਿਕ ਇੱਜ਼ਤ ਵੀ ਹੈ ਇੱਕ ਸਮਾਜਿਕ ਸਾਡਾ ਵਰਤਾਰਾ ਵੀ ਹੈ ਲੋਗਾ ਰੀਤ ਵੀ ਹੈ ਤਾਂ ਇਹ ਕਹਿਆ ਦੁਤਿਆ ਤਿਆਗ ਲੋਗਾ ਲੋਗਾ ਰੀਤ ਰੀਤ ਇਹ ਕਰਦੀ ਹੈ ਪਰ ਜਦ ਮੈਂ त्यागी ਹੋਮ ਫ੍ਰੀ ਹੋਮ ਵੀ ਬੜਾ ਕਰੂਗੇ ਵਿਆਹ ਮੈਂ ਇਹ ਹੋਇਆ ਹੋਵੇ ਇਹਦਾ ਇਹਦਾ ਹੋਮ ਫ੍ਰੀਤ ਹੋਗੀ ਨਾ ਤੇ ਉਹ ਕਰਦੇ ਨਾ ਆਪਾਂ ਦਾ ਜੱਲਾ ਜਿਹੜਾ ਕਿਸੇ ਤੇ ਪੁੱਠੇ ਨਾ ਹੋਵੇ ਇਹ ਤਾਂ ਹੋਮ ਫ੍ਰੀਤ ਹੋਗੀ ਠੀਕ ਹੈ ਜੀ ਜੇ ਇਹ ਤਿਆਗਦੇ ਵੀ ਭਾਈ ਬੜਾ ਦਾ ਆਪਣੀ ਕਰਨਾ ਨਹੀਂ ਫੇ ਲੋਗਾ ਰੀਤ ਵੀ ਤਿਆਗਦੇ ਉਹ ਨਾ ਟੱਲਾ ਜਿੰਦਗੀ ਹੈ ਕਿ ਦੀ ਇਸ ਕਾਹਨੀਆਂ ਲੋਗਾ ਰੀਤ ਕਿਥੇ ਦੀ ਜੀ ਸਦੀ ਕਰਦੀ ਆਪਾਂ ਆਪਣੀ ਜਿੰਨੀ ਤਾਕਤ ਹੈ ਉਹ ਵਧਦੀ ਜਿਹੜਾ ਆਪਣੀ ਪੈਰ ਦੇਖ ਕੇ ਤਾਕਤ ਵਧਦਾ ਉਹ ਲੋਗਾ ਰੀਤ ਉਹਦੀ ਛੱਡੀ ਹੋਈ ਹੁੰਦੀ ਹੈ के जी आपाने भी ब्याह करना रहे नहीं जन्न सदली होदी गुरु भी भी नहीं का नाम कीता है लोग आरे सब यार के नहीं ना आपाने पर ई श्री कर दी अपने ताकत में दाव हां जी के संगी न कभू ताव है साथ के संगी सब तो ताव है के मन साध न तर देखो क्या कौन साधुआ ਜੇ ਦੂਸਰ ਸਾਧਾ ਸਾਥ ਕਰਾਂਗੇ ਉਹ ਕੀ ਕਹਿੰਦਾ ਸਾਡਾ ਹਰਦਾਤ ਨਾਲ ਕਰਾਂ ਲੱਗੀ ਹੋਈ ਹੈ ਤਾਂ ਫਰਦਾ ਹੈ ਗੁਰਦਾਨ ਦਾ ਮੁੰਡਾ ਸਾਧ ਹੈ ਸਾਧ ਕਿਹੜਾ ਲਿਆ ਹੋਇਆ ਹਾਂ ਦੂਸਰ ਵੱਡਾ ਸਾਧ ਕਿਹੜਾ ਲਿਆ ਕੇ ਆਉਂਗੇ ਤੁਸੀਂ ਇਹਨਾਂ ਦੇ ਇਤਿਹਾਸ ਤੋਂ ਵੀ ਫੜ ਕੇ ਕੋਟੋਣਾ ਥਪੜਾਈ ਕਰੋ ਇਸ ਪਾਈਦਾ ਵੀ ਗਾਹ ਨਾਨਕੋ ਵਰਦਾਨਾ ਕਹਿੰਦਾ ਮੈਨੂੰ ਭੁੱਖ ਲੱਗੀ ਏ। ਨਾਲ ਤੋਂ ਬੜਾ ਸਾ ਲਿਆ ਫਿਰ ਕਿਹੜਾ? ਹੁਣ ਆਲੇ ਸਾਥ ਕਹਿੰਦੇ ਨੇ ਸਾਥ ਦੇ ਸਾਡੇ ਸੰਗ ਮੱਖੋ ਜਲੂ ਹੁੰਦਾ। ਨਾਲ ਦੇ ਹੋਇਆ ਜੀ। ਇਹ ਨਾਨਕ ਬੜੇ ਹੋਂ ਫਿਰ। ਉਹ ਪਾਈ ਮਾਨ ਦੇ ਨਜ਼ਰ ਨਹੀਂ ਸਾਦਾ। ਜੇ ਵਰਦਾਨਾ ਕਹਿੰਦਾ ਸੀ ਵਰਦਾਨਾ ਮੇਰਾ ਬੰਦੀ ਸੀ ਸਦੇ ਹੋਇਆ ਫਿਰ। ਨਾਲ ਦੇ ਦਾਸ। ਨਾਲ ਕੋ ਸਤੋ ਵਸੀਰ ਨਹੀਂ ਜੀ ਸਤੋ। ये कौन गे नाथू सिंह फक थोड़े अर्थ किस वेस्ते कर रहे हो आज किस वेस्ते अर्थ कर रहे हो मुझे समझो मैं कब होता हूं तो ऐसा तो मैं करता तो वो भरने की जगह था जैसे पानी होता ही नहीं पानी है नहीं बकरा की जैसे होता है की पानी साथ के संग सदा सुत पानी तो पर जे होने ਰਾਮ ਕੋ ਤੋਂ ਦਾ ਜਿਕੇ ਦਾਕ ਵੱਲ ਭਜੇ ਨੇ ਉਹਦੇ ਬਾਣੀ ਹੁੰਦਾ ਹੀ ਨਹੀਂਗਾ ਉਹਦਾ ਆਗੈ ਤਰੇ ਨਾ ਹੋਈ ਸਤਕੇ ਸੰਗੀ ਸਦਾ ਸੁਖ ਪਾਵੇ ਹਾਂ ਸਦਾ ਸੁਖ ਆ ਸਾਧਕੇ ਸਾਧੇ ਬਿਨਾ ਸਦਾ ਸੁਖ ਕਿਵੇਂ ਹੁੰੂ ਆਪਣਾ ਮਨ ਸਾਧ ਲਿਆ ਤਾਂ ਸਦਾ ਸੁਖ ਜੇ ਆਪਾ ਦੂਰ ਸਾਧ ਕਹਾਂਗੇ ਉਹਦੇ ਉਹਦੇ ਸਤ ਦਾ ਸੁਖ ਸਦਾ ਸਾ ਅੱਜ ਤਾ ਜਿਹੜੇ ਆਪਣੇ ਸਾਧ ਕਹੂਦੇ ਨੇ ਆਪਣੇ ਆਪ ਨੂੰ ਉਹਨਾਂ ਦੇ ਅੰਦਰ ਸੁਖ ਦਾ ਸਾਧ ਕਿ ਕਦਾ ਕਹੇ ਵੀ ਮੈਂ ਸੁਖੀ ਹਾਂ ਸਦਾ ਸੁਖਾ ਮੇਰੇ ਕੋਲ ਤੇ ਇਹੀ ਅਰਥ ਬਣਦੇ ਨੇ ਇਹ ਅਰਥ ਬਣ ਗਏ ਪੜ੍ਹਨੀ ਚਾਹੁੰਦੇ ਆ ਸਾਧ ਸੰਗ ਕਰਨਾ ਹਾਂ ਤੁਸੀਂ ਕਹ ਕਰਾ ਕੇ ਸੋ ਦੇ ਕੇ ਦਿਖਾਵੇ ਜੇ ਸੋ ਬੋਲ ਜੋ ਵੇਖੇ ਅੱਖਾਂ ਕੋਰਾਂ ਨੇ ਅਖਰਾਂ ਦੇਖਿਆ ਜਿਨ੍ਹਾਂ ਨੇ ਬੰਸ ਸਾਲ ਲਿਆ ਉਹ ਸਦਾ ਸੁਖੀ। ਕੋਈ ਨਹੀਂ ਪਿਛੋਂ ਲੈ ਕੇ ਭਗਤਾਂ ਦੀ ਲਿਸਟ ਹੈ। ਅੱਗੇ ਉਹਨਾਂ ਦੇ ਕੋਲ ਵੀ ਹੈਗੇ ਨੇ ਬੰਦੇ। ਗੁਰੂ ਅਰਜਨ 4 ਵੀ ਬੈਠੇ ਨੇ ਬੰਦੇ ਕੁਝ ਨੁਕਸ ਜਿਹੜੇ ਰੋਜ਼ ਸੰਤ ਕਰਦੇ ਨੇ ਆਉਂਦੇ ਨੇ। ਜਿਹੜੇ ਸਦਾ ਸੁਖੀ ਉਸ ਅਸਰ ਹੀ ਗਏ ਹੋਏ ਨੇ ਸਤਿਓ ਨੇ। ਤੇ ਆਪਣੇ ਮਨੇ ਸਾਥੇ ਉਹਨਾਂ ਨੇ ਉਹ ਵੀ ਚੱਲੇ। ਉਹਨੇ ਬਣਾਇਆ ਮਨੇ ਸਾਥੇ। ਗੁਰੂ ਕੀ ਸੰਤਤ ਦੀ ਗੱਲ ਨਹੀਂ ਹੈ। ਉਹ ਤਾਂ ਆਪਣੀ ਨਾਲ 6 ਮਹੀਨੇ 2 ਮਹੀਨੇ 2 ਮਹੀਨਾ 2 ਮਹੀਨਾ ਵੀ ਚੱਲ ਰਹੇ ਸੰਤ ਕਿਤੇ ਘਰ ਚਲੇ ਜਾਂਦੇ ਸੀ ਉਹ ਸਾਧ ਇੱਥੇ ਸੀ ਮਨ ਸਾਧਨ ਹੁੰਦੇ ਸੀ ਉਹ ਸੀ ਮਨ ਨੂੰ ਬਣਾ ਲੈਣਾ ਰੱਖ ਗਰੀਬੀ ਬੇਸ ਵੀ ਪ੍ਰਭਾਵ ਪੈਂਦਾ ਸਾਰ ਸੰਸਾਰ ਦਾ ਉਹ ਚਲ ਰਿਹਾ ਹੈ ਬਕੋਚਰ ਵਸਤ ਹੈ ਕੋਈ ਚਰ ਵਸਤ ਆਤਮ ਗਿਆਨ ਹੁੰਦਾ ਜਿਹੜੀ ਐ ਸੰਸਾਰ ਤੋਂ ਬਾਅਦ ਚੱਲਦੀ ਇਹਨਾਂ ਫਰਾਕ ਹੈ ਸਾਡੀ ਉਹ ਬੋਚਰ ਵਸਤ ਹੈ ਐਥੇ ਵੀ ਫਰਾਕ ਹੈ ਉੱਥੇ ਵੀ ਫਿਰ ਉਹ ਤੇ ਕਿਵਸ ਦਾ ਹਾਰਾ ਉਪਰਤ ਕੰਮ ਕਰਿਆ ਜਿੱਥੇ ਵੀ ਤਰਖਾ ਦੀ ਚਦੂ ਗਲ ਹੋਈ ਪਛਾ ਲੱਗੀ ਉੱਥੇ ਜਦ ਇਹ ਬਰਤਬਰ ਜਾ ਉੱਥੇ ਨਹੀਂ ਤੇ ਸ਼ਨਾ ਬੋਝਾ ਤੇ ਇੱਥੇ ਵੀ ਉੱਥੇ ਵੀ ਉੱਥੇ ਵੀ ਤਾਂ ਇੱਥੇ ਪੈਦਾ ਹੋ ਸਕਦੀ ਹੈ ਚੋਣੀ ਹੋ ਸਕਦੀ ਹੈ ਹੈ ਏਸੇ ਨਾਲ ਬਚਾਉਣਾ ਵਿਚਾਰ ਦੀ ਵਿਚਾਰ ਨਾਲ ਬਚ ਸਕੀਏ ਮਨ ਵਿੱਚ ਧੋਨਾ ਵਿਚਾਰ ਨੇ ਉਹਨੂੰ ਦਬਾਉਣਾ ਜਿਹਦਾ ਦਬਾ ਦੇ ਅੰਦਰਸ ਬਰਖ ਗਿਆ ਫਿਰ ਉਹ ਬਚ ਗਿਆ ਨਹੀਂ ਦੋਫੜ ਹੋ ਗਿਆ ਹਰ ਵਿਸਥਾ ਸਦਾ ਤਾਂ ਫਿਰ ਸੱਚਾਈ ਵੀ ਲੱਗੂ ਇਹ ਗੱਲ ਉੱਥੇ ਲੱਗੂ ਨਹੀਂ ਸਦਾ ਨਾ ਆਇਆ ਮਾਇਆ ਵੀ ਤੈਨੂੰ ਜੋ ਗੁਣੀ ਚਾਰੇ ਨੂੰ ਘਾ ਦੇਉਂਦਾ। ਇਹੋ ਮੋਹ ਤੇ ਨਾਮ ਤੇ ਰੱਖਿਆ ਆ ਗੱਲ। ਹਾਂ। ਨਾਮ ਉਹ ਨਾਮ ਤੇ ਰੱਖਿਆ। ਹੱਥ ਜਦੋਂ ਛੁੱਟ ਗਏ ਕਾਚੋ ਵੀ ਥੱਲੇ ਡਿੱਗਦਾ। ਉਹ ਨਾ ਜਰੇ ਉੜਦਾ ਜੇ ਹੁਕਮ ਨੂੰ ਮੱਤ ਪਾ ਕੇ ਰੱਖਦਾ। ਮਾਹ ਹੱਥ ਜਿਹੜਾ ਮਾਣਾ ਹੱਥ ਹੁਕਮ ਨੂੰ ਪਾ ਕੇ ਰੱਖਦਾ। ਮਾਣ ਦਾ ਹੱਥ اے مایا وال نو پوندا اے یاد حکم نو پا کے رکھوں گا او دے پاڑے نو پا کے رکھوں گا تاں او دے نال اڑوں گا جے دم دی دوے پاسے آ گیا مایا نو باراں ہاتھ نال آ نہیں تو پھڑے تاں کیہ ہویا جل جل سی واو تے آ چھڈ ਹਟਾਇਆ ਜਾਏ ਸਬਦ ਗੁਰੂ ਨਾਲ ਹਟਾਇਆ ਜਾਏ ਸਬਦ ਵਿਚਾਰ ਚੱਲਦੀ ਹੈ ਚਤਨਾ ਹਟਾਇਆ ਜਾਏ ਉਹ ਨਾਲ ਜਰੀ ਹੈ ਕੋਈ ਨਾ ਉਹ ਬਿਸਰ ਗਿਆ ਬਿਸਰਿਆ ਕਿਉਂ ਬਿਸਰਿਆ ਕੋਈ ਚੀਜ਼ ਆ ਗਈ ਵਿਚਾਲੇ ਤਾਂ ਬਿਸਰਿਆ ਉੱਥੋਂ ਬੈਠੇ ਦੀ ਮਾਇਆ ਦੀ ਦ੍ਰਿਸ਼ਟੀ ਹੈ ਮਾਇਆ ਦਾ ਸਭ ਕੁਝ ਦੇਖਦਾ ਫੋਰੇ ਕੇ ਤੇ ਫੋਰੇ ਕੰਨੇ ਹੁਣ ਜਿੰਨੇ ਉਰੇ ਗਏ ਤਾਂ ਸਮਾਂ ਬੇਰੀ ਜੀਏ ਟ੍ਰੈਕ ਕਰ ਦਦੇ। ਜਿਆਦਾ ਉਹ ਚੀਜ਼ ਦਾ ਪ੍ਰਭਾਵ ਹੈ ਤੇ ਉੱਥੇ ਵੀ ਪੈ ਜਾਊਗਾ। ਜਦੇ ਮੁਰ ਜਾ ਕੱਚਾ ਹੋਇਆ। ਬਾਈਟ ਘੱਟੀ। ਨਾ ਫਿਰ ਉੱਥੋਂ ਇੱਕ ਹੋ ਜਾਂਦਾ ਫਿਰ ਕਿਵੇਂ ਆ ਜਾਂਦਾ ਉਹਦਾ ਜਵਾਬ ਆਹ ਪ੍ਰਭਾਵ ਇੱਥੇ ਦੇਖਦਾ ਜੀ ਸਮਾਇਆ ਤਾਂ ਦਿਸਦੀ ਹੋਈ ਜਿਹੜਿਆ ਚਰਨ ਤੋਂ ਸਾਹਮਣੇ ਆਏ ਨੇ ਜੇ ਤੁਸੀਂ ਇੱਥੇ ਢੋਲ ਸੁਣ ਸਕਦੇ ਹੋ ਤਾਂ ਢੋਲ ਉੱਥੇ ਦੇਖ ਸਕਦੇ ਹੋ ਜਿਹੜਾ ਆਨੇ ਪੜਾਈ ਆ ਜੇ ਇੱਥੇ ਤੁਸੀਂ ਸੁਣ ਸਕਦੇ ਹੋ ਤਾਂ ਉੱਥੇ ਦੇਖ ਸਕਦੇ ਹੋ ਢੋਲ ਹੋ ਕੇ ਐਵੇਂ ਨਹੀਂ ਨਾਲ ਕਹਣਾ ਢੋਲਨ ਤੇਰਾ ਕੋ ਮਾਇਆ ਰਾਮ ਰਵੇ ਤੇ ਵੀ ਨੀ ਪੋਸੀਬਲ ਹੈ ਵੀ ਸਦਾ ਲੱਗ ਗਿਆ ਮਾਇਆ ਰਾਮ ਰਾਮ ਰਵੇ ਸਮਾਂ ਲਾ ਲਾ ਸਮਾਂ ਸੰਭਾ ਗਿਆ ਉਹ ਬੈਠੇ ਨਾ ਯਾਰ ਉਹਦਾ ਸਭ ਕੋ ਸਾਨੂੰ ਦੇਖਣ ਵਾਲੀ ਅੱਖ ਉਹਦੇ ਕੋਲ ਸਾਡੇ ਕੋਲ ਉਹਨੂੰ ਦੇਖਣ ਵਾਲੀ ਅੱਖ ਨਹੀਂ ਹੈ ਫਿਰ ਤਾਂ ਗੱਲ ਇਹ ਹੈ ਜੇ ਹੁਣ ਤੁਸੀਂ ਕਹੋ ਵੀ ਬਿਨਾਂ ਸਰੀਰ ਤੇ ਜੀਣਾ ਹੀ ਨਹੀਂ ਇਹ ਸਾਡੀ ਹੁਣ ਵਾਲੀ ਅਵਸਥਾ ਇਹੀ ਕਹਦੀ ਹੈ ਹੂੰ ਤੋਂ ਸਾਡੇ ਕੋਲ ਹੈ ਨਹੀਂ ਜਦੋਂ ਉਹ ਆਜੂਗਾ ਉਹ ਦਿਨ ਫਿਰ ਲੱਗੂਗਾ ਉਹ ਖਣੀਆਂ ਬਿਆਨੀਆਂ ਖੜੀਆਂ ਉਹ ਬੁੱਧੀਆਂ ਦੀ ਆ ਬੁੱਧੀਆਂ ਜਦ ਖੁੱਲ ਜੂਗੀਆਂ ਬੁੱਧੀਆਂ ਅੱਖ ਪੂਰੀ ਖੁੱਲ ਜੂਗੀ ਪਤਾ ਲੱਗੂਗਾ ਬੀਠਕ ਜਿਹੜੇ ਤੁਸੀਂ ਕਹਿੰਦੇ ਸੂਰਮੇ ਕੀ ਉਹ ਪਰੀਆਂ ਵਿਆਹੁੰਦੀਆਂ ਨੇ ਉਹਨਾਂ ਮੰਗੇ ਵੀ ਉਹ ਪਹਿਲੇ ਨੇ ਤੁਸੀਂ ਨੇ ਐਸੀ ਗੱਸਾਂ ਨੇ ਬਿਆ ਆਪਾ ਤਾਂੇ ਹੋ ਆਪਣੇ ਆਪਣੇ ਬੱਲ ਲੈ ਕੇ ਜਾਦੂ ਦੀ ਫਿਟਕੀ ਅਸਲਾ ਕਹਿਣਾ ਸਾਡੀ ਪਾਰਟੀ ਚ ਆ ਜਾ ਸਾਡੀ ਚੱਲ ਜਾ ਐਥੋਂ ਵੀ ਬਾਕੀ ਪਾਸ ਕਰਕੇ ਜਾਂਦਾ ਹੈ ਕੋਈ ਖੇਡਾਂ ਲੈ ਕੇ ਜਾਂਦਾ ਤਖੜਾ ਉਹ ਸਾਰੇ ਕਹਿੰਦੇ ਨੇ ਸਾਡੇ ਜਾ ਰੇਲਵੇ ਵਾਲੇ ਕਹਿੰਦੇ ਸਾਡੇ ਚ ਆ ਜਾ ਸਾਰੇ ਮਹਿਕ ਵੀ ਪਾਈਦੇ ਨੇ ਮੈਂ ਨਹੀਂ ਅਲੀ ਆਪਾ ਉਹ ਕਾਬੂ ਵੀ ਤੁਨ ਪੁਲਿਸ ਵਾਲੇ ਲਾਜ ਦਿੰਦੇ ਨੇ ਹਰੀ ਦਿੰਦੇ ਲਾਜ ਸਾਰੇ ਧਰਮਾਂ ਵਾਲੇ ਖਿੱਦਨ ਵੀ ਇਹਨੂੰ ਭੇਜਾਂਗੇ ਆਹ ਨੂੰ ਇਹ ਆਪਣਾ ਤਗੜਾ ਖਰਚੇ ਆਊਗਾ ਆਪਣਾ ਇਹ ਬੰਦ ਡੁੱਡਦਾ ਜਾਂਦਾ ਨਾ ਇਹਨੂੰ ਮਿੱਠੇ-ਮਿੱਠੇ ਲਾ ਕੇ ਆਊਗਾ ਐਦਾਂ ਹੁੰਦੇ ਰਹਿੰਦੇ ਨੇ ਉਹ ਜਿਹੜਾ ਆਇਆ ਸੀ ਆਪੇ ਸ਼ਗਨਾਂ ਦੇ ਆ ਪੁਗਲਦੀ ਆ ਗਈ ਮੜੀ ਜਿਆ ਆ ਇਹਦਾ ਜਿਹਨ ਦੇ ਆਨੰਦ ਇਹ ਕੌਣ ਸੀ ਇਹੋ ਸੀ ਐ ਜਾਂਦੇ ਰਹਿੰਦੇ ਨੇ ਵਿਦਵਾਨ ਜਿਆਦਾਂ ਸੱਚਾ ਸਪਤਾਸ਼ ਪ੍ਰਕਾਸ਼ ਲੱਗ ਗਿਆ ਉਹ ਇਹ ਇਹ ਤੇ ਵੀ ਆ ਭਲੇ ਨੂੰ ਇਹਨਾਂ ਬਤਾ ਦੀ ਸੀਗਾ ਹੁਣ ਪਤਾ ਲੱਗਿਆ ਕਿਨੇ ਉਹ ਆਪਣਾ ਗੁਰਜੀਤ ਰਹੇ ਤੇ ਜਿਸਕਾ ਫਸ ਗਿਆ ਹੋਗਾ ਤੈਨਾਂ ਨਾਲੇ ਦਾ ਵਿਦਵਾਨ ਹੈ ਵੀ ਸੱਚਾ ਸਪਤਾਸ਼ ਪ੍ਰਕਾਸ਼ ਦੀ ਗੱਲ ਕਰਦੀ ਉਹ ਮੈਨੂੰ ਕਹਿੰਦਾ ਮੈਂ ਲੈਂਦਾ ਮਾ ਮੇਰਾ ਪੜਿਆ ਹੋਇਆ ਆ ਤੇ ਤੁਸੀਂ ਪੜਿਆ ਮਰਾ ਹੋ ਕੰਨ ਉੱਤੇ ਹੀ ਹੈ ਉਹ ਮਾ ਕੁਛ ਨਹੀਂ ਹੈਗਾ ਤਾਹੀ ਲੜਾਂ ਮਗਾ ਉਹ ਜੇ ਪੜਨ ਲੱਗਿਆ ਆਦਮ ਵਿਦਵਾਨ ਕੱਚਾ ਹੋ ਰਿਹਾ ਤਾਂ ਬੜਾ ਵੇਸਟ ਹੋ ਜਾਂਦਾ ਸੀ ਉਹ ਪੜਾ ਉਹਦਾ ਤੇ ਉਹ ਕੈਨੇਡਾ ਤੋਂ ਉਹ ਲੈ ਆਇਆ ਸੀ ਆਹੋ ਉਹ ਮੈਂ ਉਹਨੂੰ ਗਿਆ ਵੀ ਤੂੰ ਰਹਿਣ ਦੇ ਮੇਰਾ ਦੇਖਿਆ ਹੋਇਆ ਥੋੜਾ ਜਿਆ ਮੈਨੂੰ ਮੈਨੂੰ ਉਹ ਕਹਿੰਦਾ ਵੀ ਮੈਨੂੰ ਸਮਝਾ ਦੋ अच्छा जो भी ठीक है ना सर बहुत ही गुत्ती ते बहुत सी और दो पन्ने पड़े दोए पन्ने साफ करता गुरुमत ते खसाब पछे हो गया पन्ना ठीक है <laughs> ਇਹ ਮੁਕਾਬਲਾ ਦਰਦ ਜਿਹੇ ਬਦਲ ਕੇ ਲੇਉ। ਉਹਨਾਂ ਦੇ ਵਿੱਚ ਆ ਤੌਰੇ ਮਨੇ ਵੀ ਇੱਕ ਪਰਮਾਤਮਾ ਜਨਮ ਲੈਂਦਾ ਇਕ ਲੈਂਦਾ। ਲਾ। ਭਗਵਾਨ ਮੈਨੋਂ ਕੀ ਗੱਲ ਕਰਦਾ ਜਿੰਨਾ ਪਰਮਾਤਮਾ ਜਨਮ ਲੈਂਦਾ ਜਗਣਾ ਪਹੁੰਚਾ। ਇਹ ਤਾਂ ਗੋਇੰਦ ਸਰਪੁਣੇ ਜੁਨੀ ਯਾਦਾ ਲੱਗ ਗਿਆ। ਮੈਂ ਰੁਕਦਾ ਇਹ ਜੇ ਕਹਿ ਜੀਵ ਆਤਮਾ ਨੂੰ ਪਰਮਾਤਮਾ ਕੋ ਜਾਂਦੇ ਨੇ ਨਾ ਸੇਧਾਰੀ ਨੂੰ। جے لو نام نہ کرے تا پھر وکریشن کیویں اوپروااتوں کوئی رتا تھا کوئی ادھا جنم نہیں لیندا تا لیندا اوتھے فدے نہیں او دوام فرمااتواں گئی جاتے نہیں کوئی یہ جنم بھی لیندا لیندا اونی کچھ میں اپنا کہویا ہے یہ ادھا جڑا ہے گا او مایا تو مایا ਬੇਸਨ ਮਾਇਆ ਤੋਂ ਪੈਦ ਬਿਸਨ ਕੀ ਮਾਇਆ ਹੈ ਪਰ ਬਿਸਨ ਇਹ ਮਾਇਆ ਤੋਂ ਮਾਣ ਜਲਾ ਪੈਣ ਹੋਜਵੇ ਨ ਮਾਇਆ ਦਾ ਰੀ ਹੈ ਉਹ ਜਿਹੜਾ ਬਾਹਰ ਵਿੱਚ ਜਿਸਨ ਜਪਨ ਗਈ ਹੈ ਉਹਦੀ ਉਹ ਕਹਿੰਦਾ ਤੂੰ ਵੀ ਆ ਜਾ ਆਪ ਨਹੀਂ ਜਾ ਕੇ ਦਾ ਜੀ ਆਪੇ ਡੇ ਚੜਿਆ ਹੈ ਜਾ ਉਹ ਗੱਲ ਮਾਇਆ ਉਹਨਾਂ ਦੇ ਹਾਰਡ ਚਲਾਉਣਾ ਆਉਣਾ ਪਿਆ ਉਹ ਤੋਂ ਬਿਨਾਰ ਹਾਰਡ ਕੇ ਮ ਚਲੇ ਤਾਂ ਵਰਦਾ ਜਨਾਜ਼ਰ ਕਰ ਕ੍ਰਿਸ਼ਨ ਵੀ ਅੰਦਰ ਲੈ ਜਨਾਜ਼ਰ ਕਾਲਾ ਉਹ ਕ੍ਰਿਸ਼ਨ ਨੇ ਕਹਿੰਦੇ ਨੇ ਕ੍ਰਿਸ਼ਨ ਨੂੰ ਵੀ ਉਹ ਭਗਵਾਨ ਕਹੀ ਜਾਂਦਾ ਰਾਮ ਨੂੰ ਵੀ ਭਗਵਾਨ ਕਹੀ ਜਾਂਦਾ ਨੇ ਉਹ ਕ੍ਰਿਸ਼ਨ ਵੀ ਤਾਂ ਇੱਕੋ ਹੀ ਆਂ ਭਗਵਾਨ ਹੈ ਉਹਨੇ ਗੀਤਾ ਲਿਖੀ ਉਹਨਾਂ ਵੀ ਨੋ ਰਖੇ ਹੋਏ ਉਹ ਕਹਿੰਦਾ ਫਿਰ ਵੀ ਇੱਥੇ ਤਾਂ ਆਇਆ ਰੁਕਤਾ ਕਾਲਾ ਹੋਇਆ ਹੀ ਨਹੀਂ ਕਿਸ਼ਰਬੀਏ ਭਗਵਾਨ ਬਾਕੀ ਉਹ ਥਾਣਾ ਨਾ ਤਾਂ ਭਗਵਾਨ ਨਾ ਗਿਆਨਵਾਦ ਉਹ ਕਹਿੰਦਾ ਨਾ ਉਹ ਫਿਰ ਨਾ ਜਾਵਦਾ ਮਾਨਸ ਤੇ ਜਿੱਥੇ ਟਿਕਉਂਦੀ ਹੈ ਨਾ ਉੱਥੇ ਤੋਂ ਭਗਵਾਨ ਕਹਿੰਦਾ ਨਾ ਆਪਾਂ ਕਹਿੰਦੇ ਆਪਾਂ ਦੇਖੀ ਹੱਦ ਕਰਦੇ ਨਾ ਰੁਕ ਮਟ ਕਰਦੇ ਉਹ ਅੱਗੇ ਨਹੀਂ ਕਰਦੇ ਹਾਂਜੀ ਸਾਰ ਜੰਗ ਦੀ ਵਸਤੂ ਅਗੋਚਰ ਨਾ ਹੈ ਸਾਧ ਸੰਗ ਦੀ ਅਗੋਚਰ ਹੈ ਬਾਦੂ ਸਾਧ ਕੇ ਹੀ ਜੋ ਅਗੋਚਰ ਵਸਤਾ ਹੈ ਅਗੋਚਰ ਵਸਤਾ ਹੈ ਆਇਆ ਤਾਂ ਪਰੇ ਉਹੀ ਵਸਤੂ ਆ ਜਿਹੜੀ ਖਖਰਾ ਕਹਿੰਦੀ ਹੋਰ ਕੋਈ ਕੋ ਨਾਮ ਉਹ ਨਾਮ ਰੂਪੀ ਅਗੋਚਰ ਵਸਤਾ ਉਹ ਕੀ ਹੈ ਅੰਧੇ ਆਰੇ ਦੀਪਕ ਚਹੀਏ ਇੱਕ ਵਸਤੂ ਹੋ ਜਿਹੜ ਲਈਏ ਉਹ ਅੰਧੇ ਆਰੇ ਦੀਪਕਾ ਗਿਆਨ ਕਹਿਣਾ ਵਸਤੂ ਜਿੱਥੇ ਵੀ ਸਾਡੇ ਉੱਤੇ ਹਨੇਰਾ ਹੈ ਉਹ ਹਨੇਰੇ ਨੂੰ ਚਲਣ ਵਾਸਤੇ ਰੋਸ਼ਨੀ ਦੀ ਲੋੜ ਹੈ ਹਨੇਰਾ ਅੱਗੇ ਅੱਗੇ ਤੇ ਰੋਸ਼ਨੀ ਪਿੱਛੇ ਪਿੱਛੇ ਕੋਚਾਰ ਕੋਚਾਰ ਕੋਚਾਰ ਕੋਚਾਰ ਆਖਰ ਉੱਥੇ ਤੱਕ ਪਹੁੰਚ ਜੇ ਹਨੇਰਾ ਫੇਟ ਜਾਂਦਾ ਬਿਲਕੁਲ ਯਾਦ ਬੋਧਨ ਆ ਹੈ ਨਾ ਵੇਰਾ ਚਰਦਾ ਜਾਂਦਾ ਹੈ ਵੇਰਾ ਖਾਉਂਦਾ ਜਾਂਦਾ ਹੈ ਗਿਆਨ ਨੂੰ ਸੁਠਾ ਤੇ ਅੱਗੇ ਤੇ ਅੱਗੇ ਚਰਦਾ ਰਹਿਦਾ ਮਤਲਬ ਵੇਰੇ ਦਾ ਉਜਾੜਾ ਅੱਗੇ ਤੇ ਅੱਗੇ ਹੁੰਦਾ ਰਹਿਦਾ ਅੱਗੇ ਤੇ ਅੱਗੇ ਖਤਮ ਹੁੰਦਾ ਰਹਿਦਾ ਆਖਰ ਵਰਤਕਾ ਨਹੀਂ ਕਾ ਪਹੁੰਚ ਗਿਆਨ ਜਿਹੜਾ ਹੈਗਾ ਉਸ ਤੱਕ ਪਹੁੰਚ ਜਾਂਦਾ ਹੈ ਪਰ ਮਨ ਜਾਣੀ ਜੈਸੇ ਤਰੂਪੁਰਾ ਜਦੋਂ ਹੁੰਦਾ ਹੈ ਤਾਂ ਉਪਰ ਆਕਾਸ ਤੱਕ ਪਹੁੰਚਾ ਗੋਚਰ ਜਦੋਂ ਹੁੰਦਾ ਹੈ ਗੋਚਰ ਤਾਂ ਹੁੰਦਾ ਹੈ। ਅਗੋਚਰ ਵੀ ਦਾ ਮਤਲਬ ਅਸਲ ਚ ਕੀ ਹੈ ਜਦੋਂ ਇਹਨੂੰ ਅੰਦਰੋਂ ਆਪੇ ਗਿਆਨ ਪੈਦਾ ਹੋਣ ਲੱਗਦਾ ਹੈ ਨਾ ਅੰਦਰੋਂ ਆਪੇ ਉਹ ਗੋਚਰ ਬਸ ਤਾਂ ਸੱਚ ਹੈ। ਆਪੇ ਤੋਂ ਤਾਂ ਗੱਲ ਹੀ ਸੋਚੀ ਆ ਜਿਵੇਂ ਜਿੰਨੇ ਵੀ ਬਾਣੀ ਆਇਆ ਥੋੜੀ ਥੋੜੀ ਉਹ ਜੋ ਵੀ ਆਇਆ ਵਿਚਾਰ ਦੀ ਲੋੜ ਰਾਹ ਪੇਬਲੀ ਜਾ ਤੇ ਬਣਾ ਪਹਿਲਾਂ ਪਹਿਲਾਂ ਜੱਥਰਾਸ਼ਾ ਬਣਾਇਆ ਕਹੇਗਾ ਵੀ ਜੋ ਆਦਮੀ ਕੰਮ ਕਰਦਾ ਰਾਹ ਪੇਬਲੀ ਜਾਂ ਉਹਦੇ ਪਹਿਲੇ ਦਿਨ ਇਹ ਹੈ ਜਬਣਾ ਲਿਆ ਹਰ ਖੇਤਰ ਚ ਪ੍ਰੈਕਟੀਕਲ ਕਰੇ ਦੀ ਕਰ ਦੇ ਦੇਖੋ ਪ੍ਰੈਕਟੀਕਲ ਕਰਕੇ ਸਭ ਨੂੰ ਚਾਹਤਾ ਹੈ हां जी बात है साधु बे साधु हजार से बहुत गल है ये दो तीन गलला है जड़ियां एक साडे को आंदा है परम गति भगोचर बस जा मिल दिया या परम गति पाना चेली करना सुन के समझ है वाणी ना करते हैं हम समझो आप चाहे थे सिर्फ परम गति सिर्फ गति पाई है ਚੱਲਿਆ ਚੱਲ ਰਿਹਾ ਚਲਾ ਆਪ ਵੀ ਜੋਰ ਲਾ ਰਹੇ ਹੋ ਮਦਦ ਵੀ ਆ ਦੋਵੇਂ ਚ ਆਪ ਦੋਏ ਹੈ ਜੇ ਦੋ ਜਾਨਾਂ ਦਾ ਆਕਨ ਆਇਆ ਗੱਦੀ ਰੁਕ ਜੂਗੀ ਆਜੋ ਵਿਚਾਰ ਤਾਂ ਕਰਦਾ ਦੀ ਸੰਭਚਾਗਿਓ ਉਹ ਵੀ ਬ੍ਰੇਕ ਆਉਂਦੀ ਥੋੜੀ ਜੀ ਗਾਹਾਂ ਗਿਆ ਬਤਾ ਉਹਦਾ ਜੇ ਉਹ ਆਪ ਵਿਚਾਰ ਕਰਨਾ ਸਿੱਖਵੇ ਫਿਰ ਟਾਈਮ ਚ ਸ਼ਾਇਦ ਸੰਭਚਾਉਂਦੇ ਵੀ ਲੋੜ ਨਹੀਂ ਕੈ ਲੋੜ ਕੋਚਾਰ ਤੋਂ ਬਿਨਾ ਸਾਨੂੰ ਰੋਜ਼ ਲੋੜ ਪੈਦੀ ਆਉਂਦੀ ਫਿਰ ਅਦਤ ਦੀ ਲੋੜ ਆ ਜੇ ਆਪਿਆ ਫਿਰ ਉਹ ਗੱਲਾਂ ਜਿਹੜੀਆਂ ਬਹੁਤ ਔਖੀਆਂ ਲੱਭਣੀਆਂ ਨੇ ਇਥੇ ਔਖੀਆਂ ਲੱਭਣੀਆਂ ਸਭ ਕੁਝ ਇਹ ਫਿਰ ਜਿਹੜੀ ਤੁਸੀਂ ਵਿਚਾਰ ਚ ਗੱਲ ਲੱਭਣੀ ਹੈ ਜਿਹੜੀ ਮੈਂ ਲੱਭਿਆ ਨਹੀਂ ਘਰ ਨੂੰ ਲੱਭਣੀ ਇਹ ਫਿਰ ਹੁੰਦਾ ਆ ਸਾਥੀ ਨਾਲੋਂ ਗੱਲਾਂ ਮਿਲ ਜਾਂਦੀਆਂ ਨੇ ਜਿਹੜੀਆਂ ਤੇ ਬੜੀ ਬਿਹਤਰੀਆਂ ਮਿਲਦੀਆਂ ਨੇ ਇੱਕ ਲਪਕੇ ਲਵਦਾ ਚੀਜ਼ ਦੇਖੋ ਨਾ ਇੱਕ ਤਾਂ ਆਦਮੀ ਆਪ ਖੇਤੀ ਕਰੂ ਤਾਂ ਖਾਉ ਸਬਜੀ ਇੱਕ ਵਜੋਂ ਵਿਜਾਰ ਚ ਬੜੀ ਗਿੰਦੇ ਰੈਡੀਮੈਂਟ ਇਸੀ ਦਾ ਫਰਕ ਹੈ ਉਹ ਲਾਹਾ ਇਸ ਕਰਕੇ ਸੰਦਤ ਹੈ ਉਹ ਲਾਹੇ ਦੀ ਵੀ ਗੱਲ ਹੈ ਕਿਉਂਕਿ ਗੱਲ ਜਿਹੜੀ ਉਹਦੀ ਇੱਕ ਕੋਹ ਹੁੰਦੀ ਹੈ ਜਿੱਦੀ ਤੋਂ ਛੇਤੀ ਪੱਕੀ ਹੋ ਜਵੇ ਉਹ ਠੀਕ ਹੈ ਚੰਗੀ ਹੈ ਇਸੇ ਕਰਕੇ ਗੁਰੂ ਕਰ ਕਹਿੰਦਾ ਨਾ ਪੂਰੀ ਬੜੀ ਬਲਾਇਸ ਹੋਈ ਉਹ ਇਹ ਗੁੱਜੋ ਗੁੱਜੇ ਕੋਈ ਬਾਹਰ ਹੋਣਾ ਪਹਿਲਾਂ ਹੀ ਅਸੀਂ ਸਾਧਾ ਦਾ ਪਹਿਲਾਂ ਹੀ ਨਾ ਹੋ ਬਈ ਐਡੀ ਬੜੀ ਗੱਲ ਆ ਇਹ ਤਾਂ ਚੱਕ ਮੈਨੂੰ ਸਮਝ ਆਈ ਹੈ ਇਹ ਮੈਨਾਂ ਅਕੇ ਨੂੰ ਸਮਝ ਸਕਿਆ ਫਿਰ ਕੀ ਹੋ ਤੇ ਕਿਉਂ ਇਹ ਨਾ ਕਹਿੰਦਾ ਬਿਲਕੁਲ ਸਮਝ ਆ ਗਈ ਮੈਂ फटाफट ਸਮਝਾਦਾ ਜਾ ਕੇ ਵੀ ਭਗਤਾਂ ਦੀ ਅਸਲ ਵੀ ਇਹਦੇ ਨਾਲ ਕਿਤੇ ਇੱਕ ਬੰਦੇ ਨੇ ਆਪਾਂ 30 ਪਰਕ ਬਣਾ ਕੇ ਵਰਲਡ ਚੱਕ ਦੁਵਾਈਏ ਆ ਗੱਲ ਸੀ ਨਾ ਉਹਦੀ ਹੋਰ ਕੀ ਨਾ ਗੱਲ ਪੜਾਈ ਬੜਾ ਢੀ ਬਸ ਉਹਦੀ ਕਹਿਜੋ ਉਸ ਵੇਲੇ ਬਣ ਸਕੀ ਹੋ ਜੀ ਫਿਰ ਵੀ ਬਹੁਤ ਜਿਹੜੀ ਗੱਲ ਬਹੁਤ ਆਨੰਦ ਦੀ ਗੱਲ ਸਾਰੇ ਦੁਨੀਆ ਸੁਣਦੀ ਹੋ ਕਰਦੀ ਹੋਈ ਹੈ ਜਗਾ ਜਗਾ ਬਿਲੀ ਵਰਦਾਰੇ ਬਣੇ ਹੋਏ ਉੱਤੇ ਜਾ ਕੇ ਇਸੇ ਵੀ ਰਹਿਣਾ ਟਾਕ ਜਮਾ ਕੇ ਰੱਖਤੀ ਪਤਾ ਲੱਗਾ ਕਿ ਅੱਗੇ ਕੋਈ ਆਦਮੀ ਆਏ ਹੋਏ ਸਾਰੇ ਪੱਟੇ ਤੇ ਰੱਖਦੇ ਬੜਬੜੇ ਜਿਹੜੇ ਅੱਗੇ ਹੱਸ ਆ ਜਾਂਦੇ ਸੀ ਲੋਕ ਵਲਾਵਿਲੇ ਹੁੰਦੇ ਸੀ ਕਥਾ ਵਾਤਾ ਕਥੂਰੀ ਸੁਣਦੇ ਤੇ ਕਥੂਰੀ ਦੇਦੇ ਜਾਂਦੇ ਸੀ ਉਹਦਾ ਚੋਰ ਜਿਹੜਾ ਨਹੀਂ ਜਾਂਦੇ ਉਹਦਾ ਸਾਰੇ ਚੋਰ ਨਾ ਜਾਂਦੇ ਅੱਗੇ ਅੱਗੇ ਦੀ ਹੋ ਰਹਿ ਗਈ ਮੈਂ ਦੇਖ ਕੇ ਜਾਦੂ ਦੀ ਚੋਰ ਸਤਿਰਥਾਲ ਫਿਰ ਹੁੰਦਾ ਸ਼ਾਸਤ੍ਰਾਤ ਵੀ ਬੰਦ ਕਰਕੇ ਸਭ ਕੁਝ ਬੰਦ ਕਰਤਾ ਲੋਰ ਬੰਦੇ ਕਰਦੇ ਹੁੰਦੇ ਨੇ ਪਰ ਹੁਣ ਛਾਂਨੇ ਬਾਰੇ ਸ਼ੁਰੂ ਕਰਾਂਗੇ ਕੋਈ ਸੰਤ ਨਹੀਂ ਕਰਨਗੇ ਵਿਦਵਾਨ ਕਰਨਗੇ ਚਰਚਾ ਗੋਦਾਰ ਦੀ ਕਰਾਂਗੇ ਸੰਤਰਪੇ ਇਹ ਕਰਦਣਗੇ ਜਿਆਦਾ ਸੱਜਾ ਕਰਨਗੇ ਸੰਤਾਂ ਨੂੰ ਕਹਿੰਦੇ ਕੋਈ ਸਾਬਤ ਕਰੋ ਜੇ ਬੋਲਦੇ ਜਿਹੜਾ ਸੰਤ ਬੋਲਦਾ ਸਾਬਤ ਕਰ ਦਵੇ ਆਪੇ ਫਿਰ ਇਹ ਭਾਈ ਵਿਸ ਜਾਣਾ ਗੋਲੇ ਜਿਹੜੇ ਸੰਤ ਨੇ ਇਹ ਦੇ ਰਹੇ ਨਾ ਨੇ ਕਿ ਕੋੜਾ ਖਾਣਾ ਦਾ ਮਾਲ ਹੈ ਦੇ ਦੱਸਣਗੇ ਜਾਂ ਤਾਂ ਗੋਲਾ ਚੱਲ ਕੇ ਦਿਖਾਵੇ ਜਾਂ ਤਾਂ ਚੱਲ ਕੇ ਦਿਖਾਵੇ ਗੋਲਾ ਜੀ ਹੈਗਾ ਗੱਲ ਤੋਂ ਬੈਠ ਰਿਹਾ ਬਿਸੇ ਆ ਮਝ ਮਿੱਟੀ ਘਟਾਈ ਆ ਹਾਂ ਜੀ ਸਾਧੂ ਕੇ ਸੰਗੀ ਅਜਾ ਹੈ ਅਜਾ ਹੈ ਇਹ ਜਿਹੜਾ ਗਿਆਨ ਆ ਜਾ ਹੈ ਸਾਚਿਆ ਯਾਰ ਹੁੰਦਾ ਹੈ ਹਾਂ ਬੜਾ ਉਕਰੋਨਾ ਪਰ ਸਾਧੂ ਕੇ ਸਾਧੂ ਹੈ ਤੇ ਸਾਧੂ ਹੈ ਸਾਧੂ ਹਾਂ ਸਾਧੂ ਕੇ ਸੰਗੀ ਅਜਰ ਸਹ ਹੈ ਸਾਧੂ ਦੀ ਇਹੀ ਤਰਾ ਮਾਤ ਹੈ ਸਿਰਫ ਜਿਹੜਾ ਆਪ ਸਾਧ ਲਿਆ ਜੀ ਵੀ ਉਹ ਸਾਧੂ ਹੈ ਅੱਛਾ ਹੋ ਗਿਆ ਜੇ ਤੁਸੀਂ ਉਹਦੀ ਸੰਤਨ ਕਰਦੇ ਹੋ ਉਹਦਾ ਫਲ ਇਹ ਹੈ ਵੀ ਸਾਚੀ ਜ਼ਰੂਰ ਬਠਾ ਲਗਾਣਾ ਜੀ ਤੁਹਾਨੂੰ ਅਜਰ ਤੂੰ ਜ਼ਰੂਰ ਗਲਤ ਅਫਰਦਾਸ਼ ਹੋਊਂ ਯੂ ਇਹ ਹੋਰ ਕੁਝ ਨਹੀਂ ਕਰ ਸਕਦਾ ਜਨਮ ਜੋਗਾ ਹੋ ਜਾਊਗਾ ਵਾਹ ਕੰਨ ਨਹੀਂ ਥੋੜੇ ਪਾੜਦੇ ਇਹ ਛਿੰਤਾ ਦੁੱਧ ਹੈ ਇਹ ਧਾਰਮਾਰੀ ਦਾ ਕਹਿੰਦੇ ਭਾਂਡੇ 'ਚ ਗਲੀ ਕਰ ਦਿੰਦਾ ਥੋੜੇ ਭਾਂਡੇ 'ਚ ਗਲੀ ਨਹੀਂ ਹੋਊਗੀ ਜੇ ਆਹ ਭਾਂਡੇ 'ਚ ਗਲੀ ਹੋ ਜਾਂਦੀ ਹੈ ਨਾ ਤਾਂ ਨਹੀਂ ਰਹਿਣਾ ਉਹ ਫੇਰ ਆਉਂਦੀ ਹੀ ਫਾਰਕ ਆ ਜਾਂਦਾ ਹਜ਼ਾਰਾਂ ਜਾਂਦੀ ਸਰਵੇ ਕਾਰਜ ਵਾਲਾ ਖੜੀ ਗੋ ਗਲੀ ਕਨਰੇਜਾ ਦੁੱਧ ਢਾਰਵਾ ਦੇ ਛੇੜਦੀ ਨਹੀਂ ਸੋਨੇ ਜੇ ਨਾ ਹੋਵੇ ਜਿਹੜਾ ਮਰਜੀ ਪਾਡਾ ਲਿਆ ਉਹ ਗਲੀ ਪਾਰ ਹੋ ਜਾਂਦਾ ਉਹ ਦੁੱਧ ਛੇੜ ਤਾਂ ਹੈ ਸੰਦਾ ਨਹੀਂ ਹੈ ਜੇ ਕੋਈ ਸੰਦਾ ਤਾਂ ਕਿਤੇ ਨਾ ਕਿਤੇ ਉਹ ਸਾਥ ਦੀ ਹੋਈ ਹੋਈ ਜ਼ਰੂਰ ਹੈ ਪਹਿਲਾਂ ਅੱਤਰਾ ਵਾਲਾ ਸਾਧੂ ਦਾ ਮਜਬੂਤ ਹੈ। ਕਿਹਾ ਮਹਾਰਵੀਓ ਦਾ ਸਦਿਆ ਹੋਇਆ ਜਾਂ ਬਹੁਤਾ ਮਨ ਬਹੁਤਾ ਆਜ਼ਾਦ ਨਹੀਂ ਹੈ। ਬਹੁਤਾ ਸਤਨ ਵਾਲਾ ਜੀਵਨ ਉਹਦਾ। ਬਹੁਤਾ ਸਾਧਿਆ ਹੋਇਆ ਪਿਛਲੇ ਵਾਰ। ਹੁਣ ਥੋੜਾ ਹੀ ਸਾਧਨ ਵਾਲਾ ਹੈ। ਅਰਥਾਤ ਥੋੜਾ ਹੀ ਹੈ ਬੰਨ। ਬਹੁਤਾ ਸਾਧ ਹੈ ਥੋੜਾ ਸਾਧ ਹੈ। ਇਹ ਸਰ ਕੇ ਹੋ ਇਹਨੂੰ ਬਰਦਾਸ਼ਤ ਕਰ ਲੱਗਾ ਗੱਲ। ਸਾਧੂ ਕਹੇ ਸੱਖ ਅਜਾ ਜਰਦਾ ਹਾ ਸਾਜ ਨੂੰ ਬਰਦਾਸ਼ ਸਾਜ ਨੂੰ ਕੌੜ ਜਾਂਦਾ ਸਾਡਾ ਬਿਝੂ ਮੰ ਲੜਦਾ ਸਾਖ ਦਾ ਦੀ ਸਾਇ ਸਰਦਾ ਸਾਚੀ ਹਾਂ ਸਾਧ ਕੇ ਸੰਗੀ ਬਸੇ ਤਾਂ ਉੱਚੇ ਸਾਧ ਕੇ ਅਗੇ ਸੋਣਾ ਸੰਗੀ ਦੀ ਗੱਲ ਹੈ ਬੰਦੂ ਸਾਧ ਕੇ ਸਾਧੂ ਦੇ ਸੰਗ ਉੱਚਾ ਤਾਂ ਨਹੀਂ ਸਾਧੂ ਦੇ ਸੰਗ ਨਹੀਂ ਮੈਂ ਤਾਂ ਪਸੂਆ ਸਾਧੂ ਦਾ ਚਾਲਨ ਵਸੂਗਾ ਉੱਚੇ ਕੇ ਬਾਜੂ ਹੁਣ ਅਰਥ ਦੋ ਇਹਨੇ ਕੀ ਜਾਇਓ ਦੋ ਯਾਦ ਕਰਾਂਗੇ ਆਪਾਂ ਜੇ ਸਾਧੂ ਦੇ ਸਾਹਨਾ ਪਾਸ ਕਰੇ ਉੱਚੇ ਬਸੂਗਾ ਉਥੇ ਉੱਚੇ ਕੇ ਮੈਂ ਬਸੂ ਸਾਧੂ ਤੋਂ ਉਦਿਆਂ ਜੁੱਤੀਆਂ ਝਾੜੂ ਦੇ ਬਾਹਰ ਰੱਖ ਦੋ ਰਾਸਵਾਨ ਕੇ ਉੱਚੇ ਕੇ ਫੇਰ ਅਲਕੀਆਤ ਨੂੰ ਸਾਧਕੇ ਸੰਗੀਤ ਬਸੇ ਬਸੇ ਤੁਹਾਨੂੰ ਆਪਣੇ ਜਿਹਨੇ ਮਾਰ ਸਾਧ ਲਿਆ ਉਹਦੀ ਵਿਵਸਥਾ ਉੱਚੀ ਬਸਾਉਣੀ ਕਿਹੜੀ ਉੱਚੀ ਚ ਉਹ ਬੇਫਰੀਦ ਨਹੀਂ ਉਤੀ ਲੋਗਾ ਰੀਤ ਦੀ ਉਤੀ ਤ੍ਰੈ ਗੁਣ ਆਯਾ ਦਾ ਉੱਪਰ ਹੁੰਦਾ ਚੱਡ ਗੱਲਾਂ ਹੁੰਦੀਆਂ ਚੌਥੀ ਵੀ ਹੁੰਦੀ ਹੈ ਉਹ ਮਨ ਖਪ ਜ਼ਰੂਰ ਹੁੰਦੀਆਂ ਤਿੰਨ ਆਪ ਵਿੱਚ ਥਾਂ ਇਹਨਾਂ ਲੌਗਾਰਿਦਮ ਚੜ੍ਹਦੀ। ਹੋਮੇਪ੍ਰਿੰਟ ਚੜ੍ਹਦੀ। ਉਹ ਉੱਚੇ ਸੰਤਵ। ਉਹਦੇ ਹਿਸਾਬ ਵਿੱਚ। ਹੋਮੇਪ੍ਰਿੰਟ ਇਟਲੀ ਹੋਮੇਪ੍ਰਿੰਟ ਦੀ ਝੜਦਾ ਤੂੰ। ਜੀ। ਹੋਮੇਪ੍ਰਿੰਟ। ਇਹ ਚੰਗਾ ਕਹੇ ਉਹ ਚੰਗਾ ਲੱਗਦਾ। ਅੱਛਾ। ਇਹ ਟਿਪੜੀ ਇਹ ਬੜਾ ਲੰਦਾ। ਹੋਂ ਪੱਠੇ ਪਕਦੀ ਜਿਹਦੀ ਆਉਂਾ ਹੈ। ਜੇ ਜੇ ਹਮਾਨੂੰ ਪੱਟੇ ਵਧੀਆ ਚਾਹੀਦੇ ਨੇ ਹਰ ਵਕਤ ਜੁਦੀ ਆਪਣਾ ਪ੍ਰੀਤ ਹੈ ਤੇ ਕੋਮਨ ਨੂੰ ਭੁਖੀ ਮਾਰ ਕੇ ਰਾਜੀ ਹੈ ਜੇ ਨਾ ਹਮੇਂ ਛਾਗਣੀ ਹੈ ਚਾਹੀਦੀ ਹੋਜੀ ਛਾਗਣੀ ਉਹਦਾ ਅਪਰ ਇੱਕੇ ਸਬਤੇ ਜ਼ਫਰਤ ਤਿਆਗਨ ਹਰਦੀ ਸਭ ਚਾਜਤ ਹਨ ਮਨੋਂ ਤਿਆਗਿਆ ਉਹ ਨਫਰਤ ਨਵਰਤ ਦਾ ਗੁਰੂ ਨਾਮ ਨਾਲ ਪ੍ਰੇਮ। ਨਾਮ ਨਾਲ ਪ੍ਰੇਮ ਸੱਚਾ ਨਾ ਪ੍ਰੇਮ ਹੈ ਜੁੜ ਤੁਨ ਨੂੰ। ਇਹ ਨਵਰਤ ਨੂੰ ਨਹੀਂ ਜੁੜ ਸਕਦਾ ਜੀ। ਤਾਂ ਵੀ ਉੱਚ ਹੈ ਪਰ ਜੇ ਉਦੋਂ ਉੱਪਰ ਚਲਾ ਗਿਆ। ਹੋਂ ਕੇ ਫਿਰ ਤ੍ਰੈ ਗੁਣ ਵੀ ਜੇ ਤਿਆਗਦੇ। ਤ੍ਰੈ ਗੁਣ ਚਾਹਤ ਭਾਇਆ ਉਹ ਅਜੇ ਰਜੋ ਤਮਸਾ ਤੋਂ ਉੱਪਰ ਉੱਠ ਗਿਆ ਉਹਨੂੰ ਪਤਾ ਲੱਗ ਗਿਆ ਰਜੋ ਤਮਸਾ ਤੋਂ ਕੀ ਹੁੰਦੇ ਨੇ ਤਾਂ ਉਸ ਉਠੂਗਾ ਜੇ ਪਰਪਲ ਜਿਗਰੀ ਕਰੂਗਾ ਪਰ ਪੰਜ ਵਾਰ ਹੋ ਗਿਆ ਸਤਹੁਣ ਲਾ ਰਜੋ ਨਿਕਲ ਜੂ ਆਰਾਮ ਨਾਲੇ ਆ ਦਾ ਰਜੋ ਇਹ ਭਜਨ ਕਰਦੇ ਤਾਂ ਉਹ ਜੇ ਸਤੋ ਚਲਿਆ ਗਿਆ ਉਥੇ ਪਰਪੰਚ ਜਦੋਂ ਬਚ ਗਿਆ ਤਾਂ ਉਹ ਰਿਜਨ ਫੇਰ ਤੁਰਿਆ ਕੋਣ ਮਿਲਦਾ ਸੱਚ ਤੇ ਬਣਾ ਕੇ ਆਊਗਾ ਸਤ ਸੰਤੋ ਕੋ ਤੇ ਸਦਾ ਉਣ ਕੇ ਸੰਤੋ ਸਦਾ ਉਣ ਕੇ ਜੇ ਤੁਰ ਗਿਆ ਸਤੋ ਉਹ ਫੇਰ ਤਾਂ ਇਹੋ ਕਹਿਣਾ ਫਰੀਦ ਵੀ ਟੁੱਟ ਨਾ ਜਾਵੇ ਹੋਣਾ ਰਿਆ ਬੰਦਿਆ ਤਾਂ ਸਤੋ ਕੋ ਨਹੀਂ ਹੈ ਕਿ ریال ਦਾ آ رہا باڈو پچھوے جا نہ پاڑی ہٹ کر ٹٹ گیا تا دیکھ لا او تو برا آ رہا تو چلیا جان دتا بن گئی نا وہ ڈھیر سی پانی بنن کو نبی اللہ نام دا تی رب کल्पना تیاگ دی تے ਮਾਤਾ ਜਗਾ ਹੋਗੀ ਦੁਨੀਆਂ ਜਗਾ ਮਗਰ ਲਾਗੀ ਫੇਰ ਕਾਜ ਆਉਂਦਾ ਹੈ ਇਥੇ ਆ ਗਈ ਬਣ ਜਾਂਦਾ ਮਾਪੁਰਸਰ ਉਹ ਹੋੜ ਕੇ ਉਹ ਜੀ ਕਹਿੰਦਾ ਕਿ ਸਮਝ ਬੜ ਦਿੰਦਾ ਸਰਾਫ ਦਿੰਦਾ ਰਿਸ਼ੀ ਬੜੀ ਹੀ ਉਹ ਕਰ ਦਿੰਦਾ ਹੋਰ ਕਰ ਦਿੰਦਾ ਕੇਦਰੀ ਅਦਾਸ ਕਰਤੀ ਵੇ ਦਾ ਕੋਸ ਕਰ ਲਿਆ ਇਹ ਤਾਂ ਜाहिर ਕਰਨ ਲੱਗਿਆ ਸਭ ਤਾਂ ਹੀ ਮੰਨਤਾ ਹੁੰਦੀ ਹੈ ਹਾਂ ਤਾਂ ਹੀ ਪਤਾ ਦਾ ਪਤਾ ਲੱਗੇ ਜਾਂਦਾ ਹੈ ਲੱਗਦਾ ਇਹ ਉਹਦੀ ਗੱਲ ਕਰਦੇ ਬੇਟੇ ਜੀ ਦਾ ਮੈਂ ਉਹੀ ਗੱਲ ਕਰ ਰਿਹਾ ਹਾਂ ਪਰ ਪਟਚੋ ਉਹ ਘਰ ਵਾਲੇ ਬੀਵੀ ਕਰਦਾਂਗੇ ਲੋ ਲੋ ਘੁਮਾਡੀ ਕਰਵਾ ਰਹੇ ਨੇ ਉਹ ਦੇਖੋ ਵੀ ਬੈਠਾਣ ਆਏ ਨੇ ਆ ਕੇ ਦੇਖ ਲੋ ਜੂਰੀ ਇੱਥੇ ਬਿਠੇ ਰਹੇ ਅਜਨੇ ਆਪ ਨਹੀਂ ਉਹ ਕਰਦੇ ਉਹਨੇ ਪਿਛਲੇ ਕਰ ਲੈਂਦੇ ਨੇ ਪੂਹੀ ਰਹੀ ਜਨੇ ਹਾਂਜੀ संगीत बसे ऊंचे साध बे संग महल पहुंचे ऊंचे ते ਟ੍ਰੈਗੋਨ ਮੇਡ ਟ੍ਰੈਗੋਨ ਆ ਤਨਾ ਗੁਣਾਂ ਤੋਂ ਰਜੋ ਤਮਸ ਸਤੋ ਦੀ ਵੀ ਪਰਵਾਹ ਨਹੀਂ ਸਤੋ ਜਾਂਦਾ ਮੈਨੂੰ ਲੋਕ ਜੰਮਾ ਕਹਣ ਸਤੋ ਉਹਦੇ ਕੰਮ ਗਾਣੇ ਲੰਗਰ ਚਰਵਾਣੇ ਕੁੜੀਆਂ ਦੇ ਵਿਆਹ ਕਰਤੇ ਉਹ ਕਰਤੇ ਜਿਆਦਾ ਧਰਮ ਦੇ ਕੰਮ ਇਸ ਤੋਂ ਗੁੜੀਆਂ ਜਾਂਦੀ ਉੱਥੇ ਜਾਂਦਾ ਆ ਮੈਂ ਕਰਤਾ ਜਾਂਦਾ ਉੱਥੇ ਜੈ ਤੇ ਫਿਰ ਮੈਂ ਘੱਪੇ ਜਾਂਦਾ ਉਹਦੇ ਬਾਪ जा ਗਿਆ ਇਹ ਤੁਕ ਕੇ ਵੱਜੇ ਨਾ फिर ਉੜ ਚੋਗੀ ਫੇਰ ਸਦਾ ਉੜ ਚੋ ਕਰੂਗਾ ਤਾਂ ਦੋਏ ਐਸਵਾ ਰਹਣ ਸਭ ਕੋ ਕਾਲ ਜ਼ਬਤ ਕੋ ਕਰਤਾ ਇਸ ਵਾਰ ਸਦੋ ਉਹ ਨਾਲ ਕਹਿੰਦੇ ਸ਼ਰਾਬ ਨਾ ਪੀਓ ਮਾਸਰਾਂ ਗਾਓ ਹੂੰ ਉਹ ਸਭ ਉਹ ਕਾਲ ਕਰੇ ਮੜੀਂ ਸਭ ਦਾ ਉਹ ਜਿਹੜਾ ਸਬਕਾ ਕਾਲ ਹੈ ਉਹਨੂੰ ਡੇਢ ਇੱਕ ਮਿਲਣ ਦੇ ਤੂੰ ਉਹਦੀਆਂ ਅੱਖਾਂ ਜੱਖਾਂ ਪਾ ਕੇ ਮਾਸ ਨਹੀਂ ਖਾਂਦੇ ਸ਼ਰਾਬ ਨਹੀਂ ਪੀਂਦੇ ਸਭ ਕੋ ਹੈ ਜਿਹੜਾ ਉਹਦੀਆਂ ਅੱਖਾਂ ਜੱਖਾਂ ਪਾ ਕੇ ਦੀ ਜੱਖੜਾ ਨਾ ਤੇ ਮਰ ਜਾਨੇ ਗੱਲਾਂ ਉਹਦਾ ਪਤਾ ਤੁਹਾਨੂੰ ਵੀ ਹੁੰਦਾ ਕਾ ਕਹੋਣਾ ਜੀ ਤੇ ਕੋਈ ਜਾਣੇ ਆ ਕੋਤੇ ਕੋਣ ਹੋ ਰੋੜੀ ਬੜੀ ਨਰੇ ਪਰਪਤੀ ਸਭ ਕੁ ਬਾਸ ਕਰ ਚਲ ਉਹ ਹੀ ਡਰਪੋ ਅਗਿਆਨਤਾ ਅਗਰ ਅਲੂ ਰੂੜੀ ਸਮਝਦੇ ਜੀਵ ਉਹਨੂੰ ਜੀ ਨਾ ਮੁਰਗੜ ਮੁਰਗਾ ਹੋਰ ਕੋ ਕਹਤਾ ਜਾਂਦੀ ਪਰਵਾ ਸਿੱਧਾ ਹੁਕਮ برداشت ਕਰ ਮੈਂ ਕਰ ਲੂਆ ਫਿਰ ਕਿਉਂ ਨਹੀਂ ਦੋਵੇਂ ਸੁਭਾਉਣੇ ਨਾ ਦਰਸ਼ਨ ਦੋਦਾ ਜੰਮ ਮਰਾਉ ਭਾਈ ਹੁਕਮ ਚਾਉਂਦੇ ਹੀ ਦੀ ਇਹ ਹੁਕਮ ਜਿਵੇਂ ਆਏਗੇ ਜੋ ਹੁਕਮ ਦੇ ਅਗੇ ਤੇ اے حکم ਦੇ دائرے تے آ ای نہیں سکدے لوگ پتہ ای نہیں آ سکدے پھنباب والے جڑا حکم جا گیا پھنباب ہو دئی 20 نیڑے گڑ گئے لونگے ایتھوں کم نکڑنے دے اڑڑ کے خیال ہے جڑا نکڑدا لے উকیلے چاتہ کر لینے ہے مرجی چاتہ گیا ਜਾਂ ਗਲੇ ਤੋਂ ਆਪਣੇ ਪੱਤੇ ਦਿਖਾ ਕੇ ਥੇਲੇ ਐ ਸੱਚ ਪੱਤੇ ਦਿਖਾ ਕੇ ਵੇਲਾ ਹੁੰਦਾ। ਵਿਖੋਣ ਵਾਲਾ ਸਾਡੇ ਨੂੰ ਕੁਛ ਨਹੀਂ ਆਪ ਨੂੰ ਕਿਉਂ ਰਖੋਗੇ? ਝੂਠ ਲਗੋਗੇ। ਫਰੇਬ ਲਗੋਗੇ। ਠੱਗੀ ਲੁਕੇ ਬੇਈਮਾਨੀ ਲੁਕੇ ਬੇਈਮਾਨ। ਬੇਈਮਾਨੀ ਲਗਈਆ ਠੀਕ। ਸੱਚ ਕਿਉਂ ਲਗੋਈਏ ਅਸੀਂ? ਜਾਂ ਕਹਿੰਦੇ ਕਾਰਨੂ ਪਹਿਣੀ ਉਹਨੂੰ। ਹਾਂ? ਕਾਰਨੂ ਹਲੂ ਬਹਾਦਰ ਜਦੋਂ ਤੇ ਇਹ ਗੁਰਾਂ ਦੀ ਜਵਾਨਿਕ ਮੰਨਿਕਲਣਾਂ ਦਾ ਵੀ ਇਹ ਇੰਦਾ ਕਹਿੰਦਾ ਜਿਆਦਾ ਉਹ ਨਵ ਪੜੇ ਕਰਦਾ ਸੀ ਸ਼ਰਮ ਕਰ ਪੈਂਦਾ ਰਣ ਮੇ ਤਬ ਜੂਝ ਮਰੂੰ ਇਹ ਜੂਝ ਰਣ ਦੇ ਸਾਹਮਣੇ ਬੰਗਲਾ ਗੱਲ ਹਾਂ ਇਹ ਕਿ ਬੁੱਕ اوکے گھڑی نہ دیکھڑے ہی منگن گے روز ای آوگا او بھی دیے نہ تے مار کے یا او بھی دیے کہندے دیے کہندے ہاں دیے سہی کہندے اوکھے دے نے ਔਕਰ ਸਭ ਖਾਤਾ ਦੋਖਸਾ ਸੁਖਾ ਬੰਦਣਾ ਹੈ ਤੁਹਾਡਾ ਮੰਦੀ ਉੱਠਾ ਜਿਹੜੀ ਨਰੀ ਕੋਈ ਆ ਕੋਈ ਸਾਡੀ ਔਖੀ ਹੈ ਪਰ ਜਿਹੜੀ ਔਖੀ ਘੜੀ ਹੈ ਉਹ ਉਹਦਾ ਦਾਤ ਹੈ ਉਹਦਾ ਰੋ ਉਹਦਾ दारू ਹੈ ਸੁਖ ਦਾ दारू ਹੈ ਇਹ ਕਹਿੰਦੇ दारू ਦਈਓ ਸਾਧੂ ਫੇਰ ਉਹ ਜੇ ਫੇਰੇ ਰਹੋ ਨਹੀਂ दारू ਲੜੀ ਕਰੇ ਰਹੋ ਉਹ ਜੇ ਇਹ ਨਾਲ ਜੇ ਗੁਰਬਾਣੀ ਪਤਾ ਗੁਰਬਾਨੇ ਕਬੱਤ ਕਰਦੀ ਹੈ ਸਾਰਿਆਂ ਨਾਲ ਯਾਦ ਕਰੋ ਕਿ ਕਬੱਤਿਆਂ ਵਰ ਕੀ ਹੈ ਇਹ ਬੜੀ ਮਿੱਠੀ ਲੱਗਦੀ ਹੈ ਕੀ ਤਨ ਸਰਵਾਰ ਕਰਾਉਣਾ ਇਹ ਜੋ ਕਿਆਂ ਨਾ ਪਤਾ ਲੱਗ ਜਾ ਤਾਹੀਂ ਉਹ ਸੁਧਰੇ ਨੂੰ ਕਹਿੰਦਾ ਸੋਧਰਾ ਇਹ ਕਹਾ ਤੁਣ ਜਾਂਦਾ ਗੁਰੂ ਕੋਲ ਉਹ ਤੋਂ ਕੋਲ ਸੁਣੀ ਪੀ ਇਹਨੇ ਆ ਕੇ ਬੈਠ ਕਰਕੇ ਬਹਿ ਗਿਆ ਪਹਿਲਾਂ ਜ਼ਰੂਰ ਲੈ ਕੇ ਜਾਵੇ ਨਾ ਉਹ ਦੇਖਿਆ ਸੀ ਮੇਰੇ ਗੁਰੂ ਉਹਨੇ ਵੀ ਹੋਈ ਜਾਈ ਤੇ ਖੇਤੇ ਸੁਧਰੇ ਨੇ ਉਹ ਜਾ ਉੱਥੇ ਗਿਆ ਮੈਂ ਕੋਈ ਇਹ ਮਾਰਦੇ ਨੇ ਸਮਲ ਭਈ ਜਦ ਹੀ ਰੋਈ ਇਹ ਆਜਾ ਤਾਂ ਕੋਈ ਅਹਿਜੇ ਸੰਗਦੇ ਨਹੀਂ ਰਹੀ ਉਹ ਹੈ ਜਾਈ ਉਹ ਮੇਰੇ ਤਾਂ ਮਗਰੇ ਦੀ ਕੋਈ ਲੱਗਦਾ ਤਾਂ ਨਹੀਂ ਲੱਗਦਾ ਅਸੀਂ ਇਹ ਜੇ ਸੰਗਦੇ ਮੇਰੇ ਚਾਲ ਲਾ ਕੇ ਮੇਰੇ ਤੇ ਜਾਨ ਨਹੀਂ ਲੱਗੇ ਗੱਲ ਮੇਰੇ ਅਣੀ ਹੋਈ ਹੈ ਤੇ ਦੂਹ ਹਾਂ ਠੀਕ ਜਿਹਾ ਬੈਠ ਕੇ ਕਰਕੇ ਭੈ ਗੁਰੂ ਵੱਲ ਉਹ ਉਹ ਵਾシャレ ਨਾ ਉਹ ਹੱਥ ਮਾਰਦਾ ਫਿਰ ਚੱਕ ਚੱਕ ਕੇ ਉਹਨਾਂ ਨੇ ਉਹ ਗੁਰੂ ਨੇ ਕਿ ਆਹ ਕਾਤੋਂ ਵੀ ਪਾਈ ਨੂੰ ਬੈਠਾ ਰਹਿਣ ਤੂੰ ਜੇ ਨੂੰ ਕੋਈ ਸੰਕੋਪ ਆਪ ਤੂੰ ਤੂੰ ਹੀ ਹੋ ਬੈਠਾ ਰਹਿਣ ਤਾਂ ਕੁਝ ਨਹੀਂ ਜਲਦੀ ਉਹ ਕੰਨ ਤਾਂ ਹੁਣ ਉਧਰੇ ਕੰਮ ਤਾਂ ਕਰਨਾ ਰਹੀਆ ਫਿਰ ਉਹ ਪੁੱਛਿਆ ਇਹ ਕੀ ਗੱਲ ਹੈ ਕਹਨਾ ਮਾਰਾ ਇਹ ਗੱਲ ਕੀ ਹੈ ਜੁੱਤੀਆਂ ਪਹਿਦੀਆਂ ਨੇ ਮਾਇਰਾ ਦੋ ਤੇ ਰੱਜ ਲਿਆ ਮਾਇਰਾ ਉਹ ਚੱਤਰ ਤਾਂ ਪਹਿਣੇ ਨਾਲ ਹੀ ਕੰਮ ਤਾਂ ਹੋਈ ਕਰਦੇ ਨੇ ਤੁਸੀਂ ਕਹਿੰਦੇ ਹੋ ਹਟ ਦੇ ਹੈ ਕੀ ਬੀਟੂ ਹੀ ਜੇ ਖਾਈ ਜਾਂਦੇ ਆਪਾਂ ਅਰੇ ਰੋ ਸਵਾਦ ਨੂੰ ਚੀਏ ਆਹਾਰਾ ਬੜਾ ਤਖੜਾ ਮੂਹ ਦੇ ਖਾਈ ਜਾਂਦੇ ਜਿਹੜੇ ਰੋਜ਼ ਇਹਨਾਂ ਨੂੰ ਬਧਾਈ ਨਹੀਂ ਆਵੇ ਸਾਡੇ ਤਾਂ ਪੱਪੜ ਪੈਂਦੇ ਨੇ ਇਹਦਾ ਸਾਖੀਆਂ ਪੁਰਾਣੇ ਜਮਾਨੇ ਦੇ ਸੁਣਿਆ ਨੇ ਸਾਡੀ ਪਰ ਠੀਕ ਹੈ ਸਾਖੀ ਵੀ ਆਪਣੀ ਤਾਂ ਮਸਾਲਾ ਵੀ ਹੁੰਦੀ ਹੈ ਮੇਰਾ ਕਹਿਣਾ ਸ਼ਰਮਤ ਨਹੀਂ ਸਾਖੀ ਠੀਕ ਹੈ ਬਿਲਕੁਲ ਮਸਾਲਾ ਮਸਾਲਾ ਚਾਹੀਏ ਸਭ ਕੋ ਕਾਰ ਕੋ ਕਰਤਾ ਹੈ ਜਿਹੜਾ ਕੋ ਦੇ ਜੇ ਸੁਭਾਉ ਆ ਹੋ ਜਾਈ ਹੁਣ ਆ ਪਊਗਾ ਜੇ ਸੁਭਾਉ ਹੋ ਜਾਂਦੀ ਤਾਂ ਕਦੇ ਵੀ ਉਹਦੇ ਉਹਦੇ ਨਾਲ ਟੇਕ ਨਹੀਂ ਲੱਗਦਾ ਜਿਹੜਾ ਪੁੱਤ ਬਾਪ 'ਚ ਵਿਸ਼ਵਾਸ ਰੱਖਦਾ ਉਹ ਅਜੇ ਉੱਥੇ ਜਾਂਦੇ ਉਹਦੇ ਕੋਲ ਪੇਸ਼ ਹੁੰਨ ਦੇ ਕਾਬਲੇ ਨਹੀਂ ਹੈ ਉਹਦੇ ਕੋਲ ਪੇਸ਼ ਨਹੀਂ ਹੋ ਸਕਦਾ ਜਾ ਕੋਈ ਦਾ ਜੋ ਥੱਲੇ ਅੰਦਰ ਹੈ ਜਿਹੜਾ ਅੰਥਲੇ ਵਾਲੇ ਗੁਰੂ ਇਹਨਾਂ ਦਾ ਜੱਲ ਹੈ ਉੱਥੇ ਜਾਊਗਾ ਸਿਰ ਹੁਕਮ ਲੈ ਜਾਈਂ ਚੱਲਣਾ ਚੱਲੂਗਾ ਫਿਰ ਹੁਕਮ ਰਜਾਈ ਚਲਾਈ ਬਸ ਮੁਕਤਾ ਚਾਬੀ ਹੈ ਹੁਕਮ ਰਜਾਈ ਕਰਨਾ ਚਾਹੀਏ ਹੁਣ ਨੇ ਕਦੇ ਰੁਕਣਾ ਹੁਣ ਨੇ ਕਦੇ ਕੁਛ ਕਰਨਾ ਕਦੇ ਕੁਛ ਕਰਨਾ ਹੁਣ ਤਾਂ ਸਾਰੀ 84 ਵਾਸਤੇ ਹੀ ਹੈ ਜਿਹੜੇ ਬਾਕੀ ਜੂਨਾ ਉਹ ਤਾਂ ਬਾਹਰ ਦੀ ਰਮ ਹੁਣ ਦੌੜਨ ਵਾਸਤੇ ਵੀ ਹੈ ਸਾਡੇ ਵਾਸਤੇ ਉਹਨੂੰ ਵਾਸਤੇ ਵੀ ਹੈ ਹੁਣ ਦੌੜਾ ਉਹਨਾਂ ਦਾ ਮਤਲਬ ਦਾ ਉਹਨਾਂ ਦਾ ਸਾਡੇ ਮੰਜ਼ੂਰ ਖਾਤਾ ਹੁਕਮ ਇੱਕ ਤਰ੍ਹਾਂ ਦਾ ਹੀ ਹੈ ਪਰ ਉਹਦੇ ਚ ਤੇ ਸਾਰੇ ਨੇ ਜਿਵੇਂ ਲਾਈਟ ਦੇ ਵਿੱਚ ਇੱਕ ਰੰਗ ਆਇਆ ਸੂਰਜ ਦੀ ਉਹਦੇ ਚ ਅਨੇਕਾਂ ਰੰਗ ਨੇ ਆਇਓ ਇੱਕ ਰੰਗ ਦਾ ਹੁਕਮ ਹੈ ਅਨੇਕਾਂ ਰੰਗ ਉਹਦੇ ਵਿੱਚ ਇਸੇ ਸਮਾਇ ਹੋਏ ਨੇ ਕੌਣ ਮਗਾ이드 ਕਰੀਆ ਨਾ ਉਹ ਬੀਜ ਮੰਤਰ ਕਹਿੰਦੇ ਸੀ ਉਹਦਾ ਜਿਹੜਾ ਸਿੱਧਾ ਹੁਕਮ ਹੈ ਉਹ ਬੀਜ ਮੰਤਰ ਉਹ ਉਸ ਬੀਜ ਮੰਤਰ ਵਿੱਚ ਸਰਬਕੋ ਗਿਆ 80 ਲੱਖ ਜੂਨ ਦਾ ਹੂਜੇ ਤਾਂ ਇਹਨਾਂ ਦਾ ਵੀ ਵਿੱਚ ਹੀ ਆਉਦੇ ਹੁਕਮ ਉਹ ਬੀਜ ਮੰਤਰ ਇੱਕੋ ਹੀ ਹੈ ਉਹ ਇੱਛਾ ਉਹਦੀ ਉਹ ਇੱਛਾ ਬੀਜ ਮੰਤਰ ਵੀਟੋਂ ਤਾਂ ਇਹ ਲਾ ਗੁਰਮੁਖਤਾਰ ਗੁਰਬਾਨ ਇਹਦਾ ਬੀਜ ਹੈ। ਜਿਹਦਾ ਬੀਜ ਹੈ ਜੋ ਬੋਲ ਕੇ ਉਹਦਾ ਵੀ ਉਹਦਾ ਹੀ ਬੀਜ। ਬੋਲਦਾ। ਜਾਨਵਰ ਕੋਈ ਵੀ ਬੋਲਦਾ। ਉਹ ਪਿੱਛੇ ਉਹ ਹੁਕਮ ਹੋਈਏ। ਹਾਂਜੀ। ਸਾਧ ਕੇ ਸੰਗੀ ਬਸੇ ਥਾਨ ਉੱਚੇ ਸਾਧ ਕਾ ਕੀ ਬਸੇ ਥਾਨ ਉੱਚੇ ਸਭ ਤੋਂ ਉੱਚਾ ਥਾਨ ਸੂਰਿਆ ਪਦ ਸੂਰਿਆ ਮਿਲ ਕੌਣ ਅਸਾਧ ਕੌਣ ਹੈ ਅਜੋ ਜਿਹੜਾ ਸਧਿਆ ਨਹੀਂ ਉਹ ਸਾਧ ਹੈ ਕੱਚਾ ਬੱਚਿਆ ਪੱਕੇ ਦੀ ਖੋਟੇ ਘਰੇ ਪਛਾਣ ਸਰਬਾਜਗਤ ਇੱਕ ਇਹਨਾਂ ਸਾਧ ਪਛਾਨੇ ਉਹ ਤੇ ਇਹਨਾਂ ਖੋਟੇ ਘਰੇ ਪਛਾਨ ਸਰਬਾਜਗਤ ਕੀ ਕਹਦੋ ਨੇ ਸਾਧ ਅਸਾਧ ਜਾਂਦੇ ਉਹ ਨਹੀਂ ਉਹਨਾਂ ਨੂੰ ਸਾਧ ਕਹੀ ਜਾਂਦੇ ਸਾਧ ਅਸਾਧ ਜਾਂਦੇ ਬਾਦ ਬਿਬਾਦ ਬਾਦ ਬਿਬਾਦ ਬਿਬਾਦ ਬਾਦ ਸੁਬਾਦ ہاں ਬਾਦ ਸੁਬਾਦ ਵੀ ਬਾਦ ਕਿਤੇ ਬਾਦ ਹੈ ਕਿਤੇ ਸੁਬਾਦ ਵੀ ਹੈ ਅੱਛਾ ਵੀ ਹੈ ਕਹਿਣਾ ਨਹੀਂ ਵਈ ਬਾਦ ਐਸਾ ਹੀ ਹੋਣਾ ਚਾਹੀਦਾ ਐਸਾ ਨਹੀਂ ਹੋਣਾ ਚਾਹੀਦਾ ਐਹੀ ਉਹ ਸਭ ਹੈ ਪੋਜ਼ਿਟਿਵ ਬਾਦ ਵੀ ਹੈ ਇਹ ਬਾਦ ਕਿਤੇ ਬੁਵਾਦ ਵੀ ਹੈ ਨਹੀਂ ਹੈ ਜਿਹੜਾ ਬੁਵਾਦ ਆ ਗਿਆ ਸਾਥ ਹੋ ਗਿਆ ਇੱਕ ਨੂੰ ਸਾਥ ਬੰਦੇ ਨੇ ਇਹ ਕੁੱਤਲੀ ਜਿਹੜੀ ਉਹਦਾ ਉਹ ਤੇ ਬਰੋ ਦੇ ਲੋਥਾ ਦੇ ਗੁੱਥੇ ਚੰਦਲ ਬਰੋ ਨਹੀਂ ਆ ਸਾਧਕਾ ਉਹ ਦੋਹਾਂ ਦਾ ਬਾਦ ਆ ਸੀ ਦੋ ਇੱਕ ਨੂੰ ਦੂਰ ਨਸਾਂ ਮਦਰੀਆਂ ਆ ਉਹੀ ਹੈ ਸਾਡੇ ਕੋਲ ਅਸੀਂ ਅੰਦਲੇ ਮੰਨਦੇ ਆ ਬਾਕੀ ਬਾਲੇ ਨੂੰ ਸੁਬਾਹ ਜਿਹੜਾ ਸੀ ਉਹਨੂੰ ਵਿਵਾਦ ਦਾ ਵਿਸ਼ਾ ਬਣਾਇਆ ਲੋਕਾਂ ਨੇ ਜਿਹੜੇ ਬੇਜੇਤੀ ਹੁੰਦੇ ਵਿਚਾਰ ਵਾਲੀ ਟੇਬਲ ਤੇ ਨਹੀਂ ਹੁੰਦੇ ਉਹ ਸਵਾਦ ਨੂੰ ਵਿਵਾਦ ਬਣਾਉਂਦੇ ਸਰਵਿਕੋ ਹੋ ਸਕਦਾ ਸਾਰੀ ਦੁਨੀਆ ਦਾ ਪਰ ਜੇ ਸਵਾਦ ਰਚਾਉਣ ਸਵਾਦ ਰਚਾਉਂਦੇ ਨਹੀਂ ਤਾਂ ਇੱਕ ਹੋ ਨਹੀਂ ਸਕਦਾ ਸਵਾਦ ਨੂੰ ਵਿਵਾਦ ਚ ਪਾਤਾ ਨੇ ਸਮਾਗਤ ਤੋਂ ਪਹਿਲਾਂ ਹੀ ਵਿਵਾਦ ਖੜਾ ਕਰ ਦਿੱਤਾ ਕਿ ਸਮਾਗਤ ਸ਼ੁਰੂ ਹੋਣਾ ਹੋਵੇ ਤੂੰ ਅਗਰ ਖੜਾ ਕਰ ਹਾਂ ਕੋਈ ਨਾ ਕੋਈ ਡੰਡਰਵੀਲਾ ਕਬਰ ਦੇ ਉੱਤੇ ਸੜਤੀ ਗੁਜ਼ਾਰੇ ਜਿਹੜਾ ਇਹਨੇ ਕੋਈ ਸਰਨਾ ਇਹਨੇ ਮੂਰਤੀ ਤੋੜਿਆ ਅੰਦੀ ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਪਰਦੇ ਪਾੜਿਆਂ ਦੇ ਸ਼ਰਾਰਤ ਕਰ ਦੇ ਜਾਨ ਗੁੱਝ ਗਈ ਗੁੱਝੇ ਜ਼ਬਾਤ ਚ ਪੈ ਗਏ ਧਰਬ ਜੋਰ ਸਾਰੇ ਘੜੇ ਜਣੂ ਜੋ ਨਜ਼ਾਰੇ ਕੋਰਾ ਜਲਾ ਪਰ ਹੁੜ ਇਹ ਗੱਲ ਸਾਰਿਆਂ ਨੂੰ ਆਏ ਉੱਪਰ ਸਰਕਾਰਾਂ ਨੂੰ ਇਹ ਸੁਭਾਚ ਪਾ ਕੇ ਚੱਣਾ ਚਾਹੀਦਾ ਸਰਕਾਰਾਂ ਨੇ ਖਰਾਬ ਕਰ ਦਿੱਤਾ ਸਭ ਨੇ ਖਰਾਬ ਕਰ ਦਿੱਤਾ ਇਹ ਤੇਰੀ ਉਧਰ ਪਾਕਿਸਤਾਨ ਜੋਗਰੀ ਜਾਂਦੇ ਇੱਥੇ ਕੋਈ ਹਿੰਦੂਤਵ ਵਾਲੇ ਇੱਥੇ ਹਲਸਾਣ ਵਾਲੇ ਕਿਤੇ ਕੋਈ ਕਿਤੇ ਕੋਈ ਕਿਤੇ ਕੋਈ ਬਹੁਤ ਅੱਛੇ ਬਗਲੇ ਇੱਥੇ ਬਗਲੇ ਔਰ ਮੀਡੀਆ ਨੂੰ ਹੈਗੀ ਜਿਆਦਾਤਰ ਜਦੋਂ ਮੀਡੀਆ ਤੇ ਹੋਈ ਜਾਂਦੀ ਡਿਬੇਟਾਂ ਹੁੰਦੀਆਂ ਹੀ ਨਾ ਨਹੀਂ ਜੀ ਮੈਂ ਇਹਨਾਂ ਨੂੰ ਗੱਲ ਆ ਪ੍ਰਚਾਰ ਤਾਂ ਹੋਣੀ ਹੋਣਾ ਪ੍ਰਚਾਰ ਬਦਲੇ ਹਾਲੇ ਤਾਂ ਸਿਰਫ ਹਾਲੇ ਤਾਂ ਪੈਸੇ ਪੂਸੇ ਤੇ ਕਬਜ਼ਾ ਤੇ ਕਬਜ਼ਾ ਹਾਂ ਕੋਈ ਆਓ ਦੇਖੋ हो का देखो ना चीज़। खेर भी है फिर ਹੋ ਗਏਗੇ ਜਦੋਂ ਦੇ ਖੋਜ ਉੱਤਰ ਖੜਦਗਾ ਨਾ ਇਹਨਾਂ ਦਾ ਸੂਚੀ ਫੇਰ ਬੜਾ ਢੀ ਪਈਆ ਫਿਰ ਬੈਟਰ ਬਿਟ ਬਲ ਨੂੰ ਵਾਲੀ ਜਾਂਦੀ ਹੁਣ ਜੇ ਇਹ ਗੁਰਦੁਆਰਾ ਲੈਕਚਰ ਚ ਆਪ ਵਾਲੇ ਫੱਦਾ ਲੈਣਗੇ ਕਿ ਉਹ ਦਾਰੀ ਵਾਲਾ ਗੱਲ ਚੱਲੂਗੀ ਕੋਰਖਸ਼ ਦੇ ਹੂੜ ਉਹਦਾ ਖਰਚ ਹੋਣਾ ਗੁਰੂ ਕਾ ਜਿਹੜਾ ਮਸਲਵਾ ਵਿਚਾਰਤਾ ਹੈ ਉਹ ਤਾਂ ਫੁਰਦ ਖਰਚ ਕਰਨਾ ਕੀ ਹੈ ਕ腐ਸ਼ੀ ਡੋਸਰ ਉਹ ਰੋਗੇ ਬਿਆਪਰਸ਼ ਜੇ ਇਹ ਕਰਦੇ ਨੇ ਪਰਸਨ ਨੂੰ ਇਹ ਤੋਂ ਗੱਲ ਬਿਲਕੁਲ ਕਰਕੇ ਲੁਕੀ ਲੱਗਦਾ ਧਿਆਨ ਨਾਲ ਹੁੰਦਾ ਕੋਈ ਪਸ ਸਾਬਦੇ ਗਰਮ ਹੋਏ ਉਹ ਜੋਪਤਾ ਕਰ ਨਹੀਂ ਸਕਦੇ ਹੁਣ ਉਹ ਚਪਕ ਕਰਨ ਵਾਲਾ ਬੇੜਾ ਗਿਆ ਉਧਰ ਨੂੰ ਬਾਅਦ ਕਿਹਾ ਕੀ ਕਲੀਅਰ ਕਰਦੇ ਹਾਂ ਹੈ ਜੋ ਦੋ ਇਹਨੂੰ ਪਹਿਲ ਦਿੱਤਾ ਉਹ ਦਿਨ ਵੀ ਕਾਲੀ ਨਾ ਕਰ ਦਿਨ ਆ ਗਏ ਉਹਨਾਂ ਨੇ ਅੱਜ ਕਹਿਤਾ ਵੀ ਅਸੀਂ ਆਧਨਾਸ਼ਾ ਦੇ ਖਿਲਾਫ ਚੱਲਾਂਗੇ ਉਹ ਦੇਖਦੇ ਤੇ ਵੀ ਬਾਦਲ ਜੀ ਕਹੂਗਾ ਦੇ 2 ਕਰੂਗਾ ਸਾਡੀ ਮਦਦ ਅਸੀਂ ਆਪੇ ਤੋਰੋਗੇ ਉਹ ਕੀ ਕਹੋਗੇ ਕਾ ਖੜੇ ਜੀ ਕਿਨੇ ਜਿਆੜੇ ਜੀ ਕਹਿੰਦੇ ਨੇ ਵੀ ਸਾਨੂੰ ਪਤਾ ਸੀ ਦੂਜਿਆਂ ਦੇ ਬਾਦਲ ਸੀਰੀਅਲ ਨਾਲ ਹੋਏ ਉਦੋਂ ਮੇਰਾ ਹੱਥ ਚਲ ਗਈ ਉਦੋਂ ਪਾਰਟੀ ਜਲਦੀ ਬਹੁਤ ਤਕੜੀ ਤਕੜੀ ਔਰ ਅਰੇ ਨਹੀਂ ਗਈ ਬੈਠੇ ਦੋਨੋਂ ਬਿਲਕੁਲ ਤਰੀਫਾਂ ਨਾਲ ਬੈਠੇ ਹੂੰ ਇਹਦੀ ਆਪਣੀ ਪਾਰਟੀ ਵੀ ਫਿਰ ਚੜਦਾ ਜਾਉਂਦੇ ਸੇ ਉਹ ਹੁਣ ਇਹਨਾਂ ਦੀ ਉਹ ਵੀ ਜਿਹੜਾ ਬਦਨਾਮ ਜ਼ਿਆਦਾ ਹੋਵੇ ਨਸ਼ਾ ਵੜੇ ਤਾਂ ਲੱਗਣੀ ਮੁਸ਼ਕਲ ਵੀ ਹੋਣੀ ਹੈ ਜੀਤੇ ਵਾਲਿਆ ਜੀ ਨੌਨਾ ਦੇ ਦੋ ਸੰਤ ਹੋਰ ਬਿਠਾ ਲਿਆ ਦੀ ਨਾਲ ਸਿੱਖਾਂ ਨੂੰ ਜੋੜ ਰਹੇ ਸਾਰੇ ਉਹ ਤਾਂ ਹੀ ਸਕੇ ਸੀ ਉਹ ਆਹ ਨਾਲ ਸਭ ਕਿੰਨਾ ਸ਼ਾਂਤ ਖਲਾਫ ਆਹੋ ਆਹਾ ਮੀਟਿੰਗ ਕੀਤੀ ਹੈ ਜਹਾਬ ਖਲਾਫ ਤੁਸੀਂ ਵੀ ਉਹ ਉਹ ਫਿਰ ਅੱਲਾਹ ਨੇ ਜਨਾਬ ਇਹ ਤੁਹਾਨੂੰ ਤੁਹਾਡੇ ਜੱਗਾਂਲੇ ਬਣਾ ਲਾਂਗੇ ਵਿੱਚ ਜਿਲੇ ਜੇਕਰ ਆਨਮਲ ਕੇ ਆਜਾ ਰਿਹਾ ਜੱਦੀ ਯੋਹਨ ਦੇ ਕਪੂਰ ਵਰ ਵਰ ਤੁਹਾਡੇ ਵੱਲ ਨੇ ਆਪ ਕਰਨ ਵਾਲੇ ਹੋ ਜਾਣਗੇ ਹਾਂਜੀ ਸਾਧਕੇ ਸੰਗੀ ਬਸੇ ਫਨ ਉੱਚੇ ਸਾਧੂ ਕੇ ਸੰਗ ਮਹਲ ਉੱਚੀ ਅਵਸਥਾ ਲੋਕ ਕੋਈ ਵੀ ਉੱਚੀ ਅਵਸਥਾ ਵਿੱਚ ਬਸ ਜਾਂਦਾ ਜਿਹੜਾ ਆਪਣੇ ਮਨ ਸਾਧ ਲਵੇ ਉਹ ਉੱਚੀ ਅਵਸਥਾ ਵਿੱਚ ਬਸਦਾ ਹੈ ਮਹਲ ਪਹੁੰਚੇ ਬਸ ਮਹਿਲ ਪਹੁੰਚੇ ਨਜ਼ਰਾਂ ਪਹੁੰਚ ਜਾਂਦਾ ਬਹਿਲਾ ਦੇ ਕੋ ਮਹਿਲਾ ਹੋਦਾ ਆਈ ਮਹਿਤ ਮਹਿਲਾ ਬਣਿਆ ਮਹਿਲਾ ਹੈ ਕਈ ਮਹਿਲਾ ਉਹ ਮਹਿਲ ਨੂੰ ਮਹਿਲਾ ਕੇ ਆਇਆ ਉਹ ਪਤਾ ਨਹੀਂ ਕਾਇ ਵਰਕੇ ਦਿੱਸਤੇ ਉਹ ਮਹਿਲ ਆਦੀ ਪਤਾ ਨਹੀਂ ਬਾਹਰ ਆਇਆ ਮਹਿਲ ਪਹੁੰਚਿਆ ਮਹਿਲ ਨੂੰ ਦਸਦੀ ਫਿਰੂ ਸਾਧੂ ਕੀ ਹੈ ਸਾਧੂ ਕੇ ਸੰਗੀ ਆਹ ਹਾਂ ਸਾਧੂ ਜੀ ਸੰਤ ਜੀ ਜਿਹੜਾੰਦਲਾ ਸਾਧੂ ਬਣ ਗਿਆ ਨਾ ਜਿਹਨੇ ਆਪਣਾ ਮਨਸਾਦ ਲੈ ਸਾਧੂ ਉਹਦਾ ਮੈਨੂੰ ਉਹੀ ਪਹੁੰਚ ਸਕਦਾ ਸਾਧਣਾ ਮਾਨਾ ਜਿਹਨੇ ਮਨਸਾਦ ਲੈ ਸਾਧੂ ਬਣ ਜਾਣਾ ਬੁੱਧੀ আর ਮਾਨਾ ਸਾਧੂ ਦੇ ਨਾਮ ਫਰਮਾ ਲਓ ਆਪਾਂ ਚਲੇ ਜਾਂਦੇ ਅਨੇ ਨਾਲੇ ਰਲ ਕੇ ਜਾਣਗੇ ਹੋਜੀ ਸਾਧਕੇ ਸੰਗੀ ਗ੍ਰਿੜੇ ਸਭ ਧਰਮ ਇਹਦਾ ਮਤਲਬ ਹੈ ਕੀ ਹੋਇਆ ਭਲਾਂ ਵੈਲ ਪਹੁੰਚੇ ਕੀ ਮਤਲਬ ਚਲੋ ਜੀ ਮੈਂ ਬੋਤਵਾ ਸਾਡੀ ਗੱਲ ਕਰ ਲੈਂਦੇ ਆਪਾਂ ਪਹਿਲਾਂ ਇਹ ਹੋ ਜਾਂਦੀ ਮੈਂ ਨਾ ਪੰਦਰਾਂ ਕੇ ਇੱਥੇ ਬਸਣ ਲੱਗ ਜਾਂਦਾ ਮੇਰੇ ਨਾਲ ਜਿ ਬਸਣ ਆ ਗਈ ਤੁਸੀਂ ਕਿਹਾ ਕਿ ਬਸਣਾ ਕਿਉਂ ਨਹੀਂ ਬਸਣਾ ਇਹ ਤੁਹਾਨੂੰ ਥਾਂ ਉੱਚਾ ਬਣੂ ਘਾਇਤਾ ਤਾਂ ਥਾਂ ਉੱਚਾ ਹੀ ਹੈ ਮਹਿਲੇ ਥਾਂ ਉੱਚਾ ਕਿੱਥੇ ਥਾਂ ਉੱਚਾ ਬਣੂ ਘਾਇਤਾ ਮੈਂ ਉਸ ਤੋਂ ਬਾਅਦ ਮੈਂ ਪਹੁੰਚ ਜਾਏਗਾ ਮਤਲਬ ਇਹ ਹੈ ਇਹ ਜਿੱਥੇ ਪਹੁੰਚ ਗਿਆ ਜਿੱਥੇ ਠਹਿਰ ਗਿਆ ਮੈਂ ਗੁਰੂਪੁਰਗਾ ਵੱਲ ਰਹੀ ਹੈ ਸਿਰ ਪਹੁੰਚਿਆ ਹੋ ਗਿਆ ਜਾਗਦੇ ਨੂੰ ਪਹੁੰਚ ਜਾਗਦਾ ਪਹੁੰਚੇ ਦੁੱਤਾ ਜਾਗਦੇ ਨੂੰ ਇਹ ਜੀ ਛੱਡਦਾ ਜਾਗਦੇ ਦੀ ਇਹ ਜੀਆ ਸ੍ਰੀ ਜਾਗਦੇ ਨੂੰ ਛੱਡਦਾ ਸ੍ਰੀ ਜਾਗਦੇ ਨੇ ਛੱਡਿਆ ਬਹੁਤ ਸਮਝ ਚੁੱਕਿਆ ਕੋਈ ਵਾਸਾ ਉਹੀ ਰਹੂਗੀ ਬਣੀ ਜੀ ਸ੍ਰੀ ਸਰਦੇ ਕੋਈ ਵਾਸਾ ਚੋਲਦੀ ਆਗਲਾ ਇਹ ਜਾਗਦੇ ਨੂੰ ਉਸ ਤੱਕ ਜਾਗਦੇ ਨੇ ਸ੍ਰੀ ਛੱਡਿਆ ਹੋਇਆ ਪਹਿਲਾਂ ਜਿਵੇਂ ਜਟੇਦਰ ਨੂੰ फर्क ਫਰਕ ਪਈ ਜੇ ਇਹ ਹੋਣਾ ਵਜੇ ਰੋ ਕੰਨੀ ਜਟੇਦਰ ਇੱਕ ਤਾਂ ਅਦ੍ਰਿਸ਼ ਹੋ ਗਿਆ ਅਦ੍ਰਿਸ਼ਤਾ ਹੈ ਆਤਮਾ ਤਾਂ ਅਦ੍ਰਿਸ਼ ਹੈ ਇੱਕ ਤਾਂ ਅਦ੍ਰਿਸ਼ ਹੈ है ਕਿੰਨ ਤੋਂ ਦਾ ਹੈ ਉਹ ਇੱਕੋ ਬਾਹੋਸ਼ ਉਹ ਨਹੀਂ ਜਿੱਦੀ ਬੈਰਾ ਕਰਦੀ ਉਹ ਆਪਣੀ ਇੱਛਾ ਸ਼ਕਤੀ ਉਹਦੀ ਧਰਮ ਦੇ ਉਹ ਆਪਣੀ ਗੜਬੜ ਕਰਦੇ ਰਹੇ ਨੇ ਕਦਰ ਕਰਦੇ ਤੇ ਜਿੱਤੇ ਸਭ ਪੂਰੀ ਹੋਣ ਕਿਹਾ ਦਾ ਕੋਈ ਜਿੱਤੇ ਉਹਨਾਂ ਦੀ ਪਾਵਰ ਹੈ ਜਿੱਤੇ ਉਹਨਾਂ ਕੋਲ ਪਾਵਰ ਹੁੰਦੀ ਗੁਪਤ ਹੈਗੇ ਨਹੀਂ ਉਹ ਉਹ ਤਾਂ ਹੀ ਬੰਦੇ ਇਹ ਉਦੋਂ ਤੋ ਹੀ 10 5 6 ਹੀ ਦਿਖਾਈਆਂ ਹੋਈਆਂ ਸਮਝਾਈ ਹੋਈਆਂ ਗੱਲਾਂ ਨੇ ਆਪਣੇ ਆਪ ਦੀ ਗੱਲ ਨਹੀਂ ਗਈ ਹੋਈ ਉਹ ਉਦੋਂ ਤੋਂ ਜਲੀਆਂ ਕੋਈ ਪੜਦਾ ਸਬਕਟ ਕਰਦਾ ਤਾਂ ਬੜਾ ਲੱਗਦਾ ਵੀ ਗੱਲ ਕਿਉਂ ਕਹਿੰਦੇ ਹੋ ਕੀ ਤੁਸੀਂ ਇਹ ਚਿੱਤੋ ਗੁੱਤ ਰਖਣਾ ਬਿਰਧਾਂ ਬਾਨੇ ਦੀ ਇਲਾਜ ਕੋਈ ਕਹਿੰਦੇ ਹੋਰ ਨਹੀਂ ਕਹਿੰਦੇ ਕੁਝ ਹਾਂ ਵੇ ਇਹ ਬਾਣਾ ਪਾ ਲਿਆ ਹੁਣ ਇਹ ਰੋੜ ਨਾ ਜਾਈਏ ਬਾਣਾ ਸਿਰੇ ਨਹੀਂ ਚੁੱਕ ਜਾ। ਜਾ ਆਹ ਬੋਲ ਕਰ। ਉਦਲਾ ਬਾਣਾ ਵਿੜਾਣੀ ਮਾਨ ਸਿੱਖੀ ਤੋਂ ਉਦੋਂ ਕਰਨਾ ਹੋਵੇ। ਕਿਉਂਕਿ ਉਦੋਂ ਘੰਟੇ ਬਾਣਾ ਲਾ ਦੋ ਜੇ ਬਚਣੂ। ਸ਼ਰਤ ਇਹ ਸੀ ਮੁਸਲਮਾਨਾਂ ਦੀ। ਗੁਰੂ ਦਾ ਬਾਣਾ ਲਾ ਦੋ। ਨਾ ਤਾਂ ਇਹਦੇ ਬਾਣੀ ਲਹਾਇਆ ਸੀ। ਉਹਦੇ ਜਾਂਦੇ ਵੀ ਵਾਦਤ ਕਰਦੇ ਬਣਾ ਲਾ ਕੇ ਬਸ ਅਦੋਨ ਦੇ ਝੋਲੇ ਅੰਦਰੋਂ ਬਾਹਰ ਦੇ ਬਣੇ ਨਹੀਂ ਗੱਲ ਉਹਦੀ ਝੋਲੇ ਅੰਦਰੋਂ ਆ ਝੋਲੇ ਤਾਂ ਅੰਦਰੋਂ ਹੀ ਆ ਬਾਲਾ ਤਾਂ ਦਾ ਡਰਦੇ ਘਣ ਲਾਏ ਬਣਾ ਜੋ ਮਰਜੀ ਜਾਵੇ ਮਾਟਕਾ ਨੂੰ ਉਹ ਲੈ ਦੀ ਬਖੂਬਲੀ ਸੀ ਇਹ ਢੋੜ ਗੁਰੂ ਤੋਂ ਉਗਾਂ ਅਸੀਂ ਤਾਂ ਆਦਰ ਚ ਨਹੀਂ ਰਹਿਣਾ ਕਾ ਨਹੀਂ ਰਿਹਾ ਇਹਦਾ ਦਿਨਾਂ ਦਾ ਨਹੀਂ ਬੀਤੇ ਕਹਿੰਦਾ ਤੁਸੀਂ ਗੁਰੂ ਕੋ ਫਿਰ ਤੁਸੀਂ ਅੱਜ ਨਾਮਧਾਰੀਏ ਬਿਲਕੁਲ ਹੀ ਛੱਡ ਗਏ ਸਿੱਖੀ ਛੱਡ ਗਏ ਦੇਖੋ ਕੀ ਹੈ ਕੋਲ 100 ਸਾਲ ਤੇ ਦੇਖੋ ਕਿੱਥੇ ਚਲੇ ਗਏ ਮੈਂ ਵੀ ਨਹੀਂ ਹੈ ਉਜਮੀ ਅੰਸਰ ਨਾਲ ਅੰਮੀ ਨਾਲ ਵੀ ਭੜੇ ਲੱਗਦੇ ਹਾਂ ਹਾਂ ਹਾਂਜੀ ਸਾਧੂ ਦੇ ਸੰਗੇ ਮਹਲ ਪਹੁੰਚੇ ਸਾਧੂ ਦੇ ਸੱਤੀ ਮਹਲ ਪਹੁੰਚੇ ਆਪਣੇ ਵਿੱਚ ਸਨ ਅਸਲ ਹੋਇਆ ਸੁਪਨੇ ਭਿਆ ਭਖਾਰੀ ਉਹ ਜਿਹੜਾ ਨਰਪਤਾ ਉਹ ਤਾਂ ਘਰੇ ਮਹਲ 'ਚ ਸੁੱਤਾ ਸੁਹਾਸਣ ਦੇ ਆਪਣੇ ਉਹਦਾ ਮਨੈ ਸੀ ਬਾਹਰ ਮਨੇ ਇਹਨਾਂ ਅਗੇ ਹੰਤਾ ਲੈਂਦਾ ਹੋਰ ਘਟ ਗਈ ਜੀ ਮਨ ਮਨ ਅਗੇ ਅੰਦਰ ਆ ਗਿਆ ਸੁਪਨਾ ਖੁੱਲ ਗਿਆ ਸੁਪਨਾ ਵੰਜੋ ਗਿਆ ਜਾਂ ਜਾਗ ਪਿਆ ਆਪੇ ਸੁਪਨਾ ਬੰਦ ਹੋ ਗਿਆ ਜਾਂ ਾਗੇ ਕੇ ਸਰੀਰ ਛੱਡਿਆ ਹੋਣਾ ਜਾਂ ਜਾ ਕੇ ਸਰੀਰ ਛੱਡਦਾ ਜਾਂ ਜਾਗਦਾ ਸੁਪਨਾ ਜਦੇ ਸੁਪਨਾ ਭਾਜ ਜਾਂਦਾ ਹੈ ਇਸ ਸਥਾਰ ਜਾਗਦੇ ਸਾਰੇ ਇਹ ਐਸੋ ਮੈਂ ਆਪਣਾ ਕੰਕ ਖੋਲਦੇ ਸਾਰ ਪਤਾ ਲੱਗਾ ਇਹਨਾਂ ਸੁਪਨਾ ਸੀ ਸੁਪਨਾ ਸੀ ਇਹ ਜਾਗਦੇ ਸਾਰੇ ਉਹਨਾਂ ਨੇ ਸੁਪਨਾ ਕਿਹਾ ਜਿਹੜੇ ਜਾਗੇ ਨੇ ਅਸੀਂ ਸੁਪਨਾ ਸੁਣਿਆ ਉਹਨਾਂ ਨੇ ਕਿਹਾ ਜਿਹਨਾਂ ਜਿਹੜੇ ਜਾਗੇ ਸੀ ਇਹ ਤਾਂ ਸੁਣੇ ਪੜਿਆ ਪਰ ਮੰਨਾਂਗੇ ਜੀ ਜਿਆਦਾ ਜਦ ਆਪ ਜਾਗ ਉਦੋਂ ਸੁਪਨਾ ਮੰਨਾਂ ਤੇ ਸੁਣਿਆ ਜ਼ਰੂਰ ਜੇਕਰ ਮੰਨ ਲਿਆ ਫਿਰ ਤਾਂ ਦੁਨੀਆਂ ਫਿਰ ਫਿਰ ਤਾਂ ਚੁੱਪ ਫਿਰ ਹਾਜੀ ਲਾਉ ਦਾ ਮਤਲਬ ਕੀ ਰਹਿ ਗਿਆ ਫਿਰ ਹਾਜੀ ਲਾਉ ਦਾ ਮਤਲਬ ਕੀ ਹੋ ਰਿਹਾ ਹੈ ਹੋਜੀ ਇਹਨਾਂ ਮੈਟਰੋਲੀ ਗਏ ਲੱਖਾਂ ਦੇ ਉਹ ਗੱਲਾਂ ਹੋਈਆਂ ਹੋਈਆਂ ਹਨਾ ਅੱਛਾ ਉਧਰ ਜਿਹੜੀਆਂ ਬਾਹਰ 86 ਹੈ ਤੇਰੇ ਖਾਨ ਖਾਨਾ अच्छा आया हां आहो ये 69 करोड़ का है 69 69 लाख ਦਾ 69 69 69 में 69 96 और oh, 96 के बीच जो 36 है अच्छा 69 करोड़ वेज ਤਸ ਜੀ ਜੇ ਤੁਸੀਂ ਕਿਵੇਂ ਗਣਤੀ ਕਰ ਲਓਗੇ ਇਹਦਾ ਅੰਮ੍ਰਿਤ ਕਬਰੀ ਆਨ ਵਾਲੀ ਹੋ ਜਿਹੜਾ ਜਿਹਨਾਂ ਰਾਜ ਕੰਮ ਕਰਨਾ ਸੀ ਉਹਨਾਂ ਨੇ ਕਹਿਤਾ ਫਾਸੀ ਲਾਹ ਤੇਰੇ ਖਾਨਖਾਨ ਨੂੰ ਦਾਦੇ ਜੀ ਫਲਾਮਾਰਤੀ ਜਾ ਕੇ ਦੂਜਿਆਂ ਦੀ ਪਹਿਲਾਂ ਘਟ ਹੋਣੀਆਂ ਨੇ ਉਹਨਾਂ ਨੇ ਸਾਡੇ ਕਹਿਤਾ ਸਾਡੇ ਜਿਆਦਾ ਨੇ ਵੋਟਾਂ ਇਹ ਆਉਤੇ ਸਾਧਿਆ ਆਪਣੇ ਵੋਟਾਂ ਕਰਨਾ ਉਹ ਸਾਡੀਆਂ ਇੰਦੀਆਂ ਨੇ ਉਹ ਕਹਿੰਦਾ ਸਾਡੀਆਂ ਇੰਦੀਆਂ ਸਾਡੀਆਂ ਸਾਝਾਂ ਨੇ ਸਾਡਾਂ ਨਾਲੋਂ ਜਿਆਦਾ ਸਾਡੀਆਂ ਨੇ ਸਜਾ ਰਹੇ। ਉਹ ਰਾਜ ਉਹ ਨਾਲ ਜਾਂਦਾ ਉੱਥੇ। ਉੱਥੇ ਤਾਂ ਹੈ ਉਹ ਨਹੀਂ ਕੋਈ ਇਹ ਜਿਹੜਾ ਧੂਏ ਦਾ ਸਾਰੇ ਥੱਲੇ ਨੇ। ਉੱਪਰ ਤਾਂ ਸੱਚਾ ਨਹੀਂ ਨਾ ਕਰਦੇ ਪਰ ਉਹ ਜਾਇ ਨਹੀਂ ਸਕਦਾ ਥੱਲੇ ਨੇ। ਅਧੂਰ। ਜਾ ਫਿਰ ਆ ਦੇ ਕੋ ਮਾਈ ਦੀ ਉਹਨਾਂ ਨੇ ਨੇੜੇ ਓਲੇ ਪਾਸੇ ਉਦੋਂ ਜਿਹੜੇ ਓਲੇ ਲੋਕ ਨਹੀਂ ਜੁੜੀ ਲੋਕ ਦੇਵਲੋਕ ਹਨਾ ਉੱਥੇ ਪਾਰਟੀਆਂ ਵੀ ਸਾਰੀਆਂ ਹਨ। ਭਵਾਨੋਤਾ ਦੇਵਤਿਆਂ ਦਾ ਹਕਾਰ ਹੁੰਦਾ। ਬੜੇ ਬੜੇ ਹੰਕਾਰੀ ਜਿਹੜੇ ਉਹ ਉੱਥੇ ਕੁਝ ਦੇਰ ਵਾਸਤੇ ਠਣਾ ਕਰਦੇ ਨੇ। ਠਣਾ ਕਰ ਜਾਂਦੇ ਜਨਮ ਲੈਣ ਤੇ। 300 ਜਨਮ ਲੈਣੇ ਨੇ ਲੋਕੀ। ਆਪਣੇ ਆਪਣੇ ਟਾਈਮ ਸਰ ਹਰੇਕ ਜਨਮ ਨੇ। ਇਹ ਹੁਣ ਸਾਡਾ ਤਾਂ ਉਹ ਵਧੀਆ ਲੱਗੂਗਾ। ਹੁਣ ਆਪਾਂ ਚੱਲਦੇ ਹਾਂ। ਇਹਨੇ ਇਸਲਾਮ ਵਾਲੇ ਆ ਗਏ। ਉਸਾ ਜੋ ਉੱਥੇ ਚੱਲਦਾ ਹੈ ਜਦ ਸਬਰ ਗਿਆ ਨੇ ਥੇੜ ਵਾਲੇ ਬਿਲਕੁਲ ਸਜਾ ਕੇ ਦੋ ਅੱਖਾਂ ਵਾਲੇ ਅੰਨੇ ਕਰਦੇ ਸਬਰ ਸਾਸਤਰ ਨੇ ਤਾਂ ਪਰਮੈਸ਼ਰ ਨੇ ਕਾਣੇ ਪੈਦਾ ਕੀ ਆ ਨਾਂ ਦੇ ਕੇ ਆਓ ਤੁਸੀਂ ਉਹਨਾਂ ਨੇ ਆ ਕੇ ਨਾਂ ਨੂੰ ਅਸਤ ਦਿੱਤੀ 1000 ਸਾਲ ਦੇ ਕਰੀਬ ਤੱਕ ਇਹਨਾਂ ਨੇ ਰਾਜ ਕੀਤਾ ਨਾਲ ਇਹਨਾਂ ਨੇ ਜਲੀਲ ਕੀਤਾ ਕਿਉਂ ਜਲੀਲ ਕਿਉਂ ਕਰ ਸਕੇ ਕਿਉਂ ਇਹ ਸਾਥੀ ਛੱਡ ਗਏ ਸੀ ਜੋ ਧਰਮ ਦੇ ਕਦਰ ਦੇ ਸਾਰੇ ਇਹਨੇ ਤੋੜ ਲੇ ਸੀ ਆਪੇ ਸਭ ਦੇ ਵਿੱਚ ਬਰਾਬਰ ਜੋਤ ਹੈ ਇਹਦੀ ਗੱਲ ਬੇਦਗਾਨਾ ਇਹਨਾਂ ਨੇ ਕਦੇ ਨਹੀਂ ਹੈ ਬਰਾਬਰ ਹੈ ਧੀ ਚਾਹੀਦੀ ਹੈ ਉੱਚਾ ਕੋੜੋਂ मन ਤੋਂ ਬੇਦਬਰ ਹੋਰ ਕਰਕੇ ਕੋੜੋਂ ਇਹ ਧਰਮ ਬਣਾ ਲਿਆ ਔਰ ਬਹੁਤ ਬੜਾ ਪਾਪ ਸੀ ਇਹ ਹੋ ਇੰਨੀ ਆਵਾਦੇ ਨੂੰ ਸਾਬ ਨਾਮ ਸੋਣ ਨਹੀਂ ਦੇਦੋ ਜਪੜੇ ਨਹੀਂ ਜਣ ਕਿਹੜਾ ਕਿਹੜੀ ਗੱਲ ਸੀ ਮੇ ਤਾਂ ਰੁੱਦੀ ਹੋਈ ਸੀ ਦੱਸੋਗਾ ਮੈਨੂੰ ਮੇਰੇ ਦੇ ਖਿਲਾਫ ਐਕਸ਼ਨ ਕਿਉਂ ਬਣਦਾ ਸੱਚ ਖਾਣ ਸੱਚ ਜੇ ਮੁਸਲਮਾਨਾ ਦਾ ਰਾਜ ਨਾ ਹੁੰਦਾ ਸਿੱਖੀ ਉਹ ਨਹੀਂ ਸੀ ਬਜਾ ਸਕਦੀ ਇੱਥੇ ਕਾਂਗਿਆ ਦੇ ਰਾਜ ਫਿਰ ਸੱਚਾ ਖੇ ਪੈਦਾ ਕਰਦੇ ਜਿਹੜੇ ਕਾਂਗਿਆ ਦੇ ਵਿੱਚ ਤਕੜੇ ਆਦਮੀ ਸੀ ਜਿਹਾਂ ਦੀ ਵਾਕਿਆ ਜਾਂ ਖੁੱਲੀ ਸੀ ਉਹਨਾਂ ਨੇ ਦੋ ਘਾਂਲੇ ਨੂੰ ਕਿਹਾ ਵੀ ਹਾਂ ਇਹ ਠੀਕ ਹੈ ਮੇਰੇ ਰੋਕ ਕੋਈ ਹਾਂਦਰ ਸੀ ਤੋ ਕੋਨੇ ਕਹੇ ਮੇਰੇ ਰੋਕੀ ਗਾ ਹੰਦੀ ਗੱਲ ਕਰਦਾ ਠੀਕ ਹੈ ਇਕਾਂ ਖਾਲੇ ਨੇ ਪਛਾਣ ਲਿਆ ਵੀ ਇਹਦੀਆਂ ਦੋ ਨੇ ਮੇਰੀ ਇੱਥੇ ਜਿਹੜੇ ਹੈ ਜੀ ਉਹਨਾਂ ਪਛਾਣ ਲਿਆ ਪਰ ਨਾ ਗੁਰਨਾਮ ਕਰਨਾ ਕੀ ਕਿਹਾ ਕਹਿੰਦਾ ਮੁਸਲਮਾਨ ਕਹਾਉਣ ਮੁਸਲਮਾਨ ਓਏ ਤਾਂ ਮੁਸਲਮਾਨ ਕਹਾਏ ਕੀ ਮਸਲ ਸੀ ਇਹ ਗੱਲ ਲਗਣਾ ਜਿਹਨੇ ਭਗਤਾਂ ਨੂੰ ਨਹੀਂ ਪਛਾਣਿਆ ਭਗਤਾਂ ਨੂੰ ਨਹੀਂ ਪਛਾਣਿਆ ਗੁਰੂਆਂ ਨੂੰ ਨਹੀਂ ਪਛਾਣਿਆ ਨਾਨਕ ਨੂੰ ਨਹੀਂ ਪਛਾਣਿਆ ਜਦ ਭਗਤੇ ਨਹੀਂ ਪਛਾਣਦਾ ਮੁਸਲਮਾਨ ਦਾਈ ਦੀ ਗੱਲ ਇਹ ਹੈ ਜਿਹਦੇ ਅੱਖ ਸੀ ਇੱਕ ਉਹ ਦੋਵਾਲੇ ਨੂੰ ਕਦੇ ਨਾ ਪਛਾਣਦਾ ਇਹਦਾ ਮਲੋਦ ਵੀ ਅੱਖ ਹੈ ਜੀ ਉਹ ਵੀ ਨਹੀਂ ਅੱਲਾ ਦਾ ਖਾਲੇ ਨੂੰ ਨਾ ਪਛਾਣੇ ਚਲੋ ਇਹਨੂੰ ਮਾਫ ਕਰ ਦਿਓ ਉਹਦਾ ਵਿਚਾਰਦਾ ਅੱਖੇ ਨੂੰ ਕੀ ਬਸ ਕਹਾਣਾ ਉਹਦੇ ਬੋਲੇ ਤਾਂ ਭਾਵੇਂ ਪਛਾਣ ਗਏ ਕਿਉਂ ਗੱਲ ਨਾ ਭਾਈ ਜਦੂ ਤੁਹਾਨੂੰ ਪਤਾ ਹੈ ਨਾ ਦਾ ਉਹ ਵੇ ਦੱਸੂ ਮੇਰੇ ਕੋ ਅੱਖਾਂ ਨੇ ਮੈਨੂੰ ਦੀਦ ਹੈ ਅੱਖਾਂ ਕੀ ਹੁੰਦੀਆਂ ਨੇ ਉਹ ਕਹੂੰ ਜੇ ਕੋਈ ਖਬਰ ਜਾਣਦਾ ਹੀ ਨਹੀਂ ਜਦੋਂ ਉਹਨੇ ਨੂੰ ਜਾਂ ਪਤਾ ਖਾਂਦੀ ਨਹੀਂ ਕੋਈ ਪਤਾ ਜਿੰਨਾ ਵਰਜਿਆਂ ਨੂੰ ਦੱਸੀ ਜਾਉ ਉਹਨੂੰ ਕੋਈ ਨਹੀਂ ਪਤਾ ਖਾਂਦੀ ਹਰਾ ਕੀ ਹੁੰਦਾ ਪੀੜਾ ਕੀ ਹੁੰਦਾ ਲਾਲ ਕੀ ਹੁੰਦਾ ਕੋੜਾ ਕੀ ਹੁੰਦਾ ਕੀ ਪਤਾ ਅਪਣੀ ਭਾਸ਼ਾ ਜੋ ਕਿਹੜੀ ਭਾਸ਼ਾ ਸਮਝਦੇ ਹੋ ਯਾਰ ਇਹ ਜਿਹੜੀਆਂ ਬੱਤਾਂ ਨੇ ਛੋਟੇ ਖਰੇ ਦੀ ਪਛਾਣ ਬਹੁਤਾ ਆਮ ਆਦਮੀ ਨੂੰ ਹੋ ਜਾਂਦੀ ਆ ਪਰ ਤੁਹਾਨੂੰ ਪਤਾ ਵੀ ਇਹ ਗੱਲ ਸੱਚ ਆ ਝੂਠ ਸੱਚ ਊਂਦੀ ਜਾਣਤਾ ਆਵੇਂ ਕੋਕਾ ਨਾ ਹੋਵੇ ਤਾਂ ਮੁਸਲਮਾਨ ਕਹੋ ਸਲਮਾਨ ਧਰਮ ਜ਼ਰੂਰ ਸੀ ਇਹਨਾਂ ਦਾ ਝੂਠ ਉਹਨੇ ਲੱਗਾ ਕਰਤਾ ਲੋਕ ਉਹਨਾਂ ਮਗਰ ਲਾ ਕੇ ਸੱਚ ਉਹਨਾਂ ਨੇ ਪਛਾੜ ਲਿਆ ਸੱਚ ਨੂੰ ਪਛਾਣਨਾ ਔਰ ਸੱਚ ਨੂੰ ਜਾਣਨਾ ਹੋਰ ਗੱਲ ਆ ਝੂਠ ਨੂੰ ਪਛਾਣ ਕੇ ਝੂਠ ਨੂੰ ਤਿਆਗ ਦੇਣਾ ਹੋਰ ਗੱਲ ਝੂਠ ਨੂੰ ਪਛਾਣ ਝੂਠ ਤਿਆਗ ਦੇਣਾ ਇਹ ਹੋਰ ਗੱਲ ਆ ਪਰ ਸੱਚ ਨੂੰ ਪਛਾਣ ਲੈਣਾ ਸੱਚਿਆਰਾ ਬਣ ਜਾਣਾ ਇਹ ਹੋਰ ਗੱਲ ਆ ਜੋ ਗਲਣਾ ਅਲੱਗ-ਅਲੱਗ ਨੇ ਪਰ ਅਸੇ ਝੂਠ ਨੂੰ ਪਛਾਣ ਲਏ ਝੂਠ ਨੂੰ ਛੱਡ ਕੇ ਹੀ ਸਿੱਖ ਬਣਦੇ ਅਜੇ ਝੂਠ ਨੂੰ ਪਛਾਣਿਆ ਨਹੀਂ ਝੂਠ ਨੂੰ ਜਾਣਿਆ ਨਹੀਂ ਝੂਠ ਛੱਡਿਆ ਉਹ ਨਹੀਂ ਪਹਿਲਾਂ ਹੀ ਸਿੱਖ ਬਣਦੇ ਜਦ ਝੂਠ ਨੂੰ ਜਾਣ ਕੇ ਝੂਠ ਨੂੰ ਪਛਾਣ ਲ ਕੇ ਝੂਠ ਨੂੰ ਤਿਆਗ ਕੇ ਸੱਚ ਨੂੰ ਅਪਣਾ ਕੇ ਪਛਾਣ ਕੇ ਤਾਂ ਸਿੱਖ ਬਣਦੇ ਸਿੱਖਾ ਖੋਣਾ ਚਾਹੀਦਾ مسلمان بحث کہ بھئی جڑا سریر ہے دے ہے بال دی یا جو بھی چیز اخرونی دی ہے او اللہ دی ہے بس اے تے વિશ્વાસ کر لو او کی ہے توں چھڈو او سچ ہے او پھر جاناں گے اگڑا جھوٹ ہے اے دکھاتا جو اخرونی نے جھوٹ ہے سچ نہیں اوناں نے تیساں گل بڈی ہوئی ہے کوئی تی کوئی گل نہیں کردا ਚਿਨਾਤਾ ਆ ਗਿਆ ਤਾਂ ਅਮਨੀ ਹੋਈ ਹੈ ਹੁਣ ਵੀ ਭਾਈ ਅਸੀਂ ਮੂਰਤੀ ਪੂਜਾ ਦੀ ਕਰਦੀ ਕਿਉਂ ਨਹੀਂ ਕਰਦੀ ਭਾਈ ਨਹੀਂ ਕਰਦੀ ਸਾਡੇ ਕਹਿੰਦੇ ਉਹ ਗਿਆਨ ਤਾਂ ਛੱਡੀ ਹੋਈ ਹੈ ਉਹ ਗਿਆਨ ਤਾਂ ਛੱਡੀ ਹੋਈ ਆ ਸਮਝੇ ਉਹ ਮੁਸਲਮਾਨ ਦੀ ਹੈ ਚਾਹੇ ਮੂਰਤੀ ਪੂਜਾ ਨਿ ਕਰਦਾ ਮੁਸਲਮਾਨਾ ਹੈ ਕਿਉਂ ਨਹੀਂ ਚਾਹੇ ਮੂਰਤੀ ਪੂਜਨੀ ਇਹਦਾ ਜਵਾਬ ਹੈ ਤਾਂ ਮੁਸਲਮਾਨਾ ਉਹਦਾ ਫਿਰ ਪਸ ਪੇਡਾ ਚਾਲ ਆ ਚਾਕੀ ਪੇਡਾ ਚਾਲ ਹੈ ਚਲਦੇ ਕੇ ਬਸ ਚਲੇ ਹਾਂਜੀ ਅਜਦਾ ਕੋਪੜਾ ਲੱਗਦਾ ਸਾਦ ਕੇ ਸੰਗੀ ਡਰੇ ਸਾਦ ਕੇ ਸੰਗੀ ਡਰੇ ਸਭ ਧਰਬ ਸਾਦ ਜਿਹਨੇ ਅਪਾ ਮਨ ਸਾਦ ਲਿਆ ਉਹਨੇ ਦੁਨੀਆ ਦੇ ਸਾਰੇ ਧਰਬ ਵੀ ਡਰ ਗਏ ਸਭ ਧਰਬ ਸਭ ਧਰਬ ਰਿੜੇ ਦੁਨੀਆਂ ਦੇ ਜਿੰਨੇ ਵੀ ਧਰਮ ਨੇ ਹਾਥੀ ਦੀ ਪੈੜ ਹੈ ਉਹ ਸਾਰੀ ਪੜਾ ਯੋਜ ਰਿੜੇ ਸਭ ਦਾ ਹਾਥੀ ਦੀ ਪੈੜ ਜਿੱਥੇ ਸਾਰੀਆਂ ਪੜਾ ਜਾਂਦੀਆਂ ਨੇ ਇਹ ਹਾਥੀ ਦੀ ਨੇ ਆ ਗਿਆ ਨਾਲ ਕੋਈ ਨਹੀਂ ਸਭ ਜਿੰਨੇ ਵੀ ਧਰਮ ਨੇ ਕੋਈ ਇੱਕ ਧਰਮ ਤੋਂ ਧਰਮੇ ਨਿਕਲ ਸਾਰੇ ਧਰਮ ਉਹ ਧਰਮ ਹੁੰਦੇ ਨਹੀਂ ਜੇ ਮਤਾਂ ਕਹਿੰਦੇ ਤੇ ਮਤਾਂ ਦੀ ਇਕੱਲੀ ਗੱਲ ਕਰ ਦਿੰਦੇ ਉਹ ਕਹਿੰਦੇ ਸਾਡੀ ਇੰਨੀ ਮਤਾਂ ਦੀ ਸਾਡੇ ਧਰਮ ਮੈਂ ਵੀ ਕਹਿੰਦਾ ਤੇ ਮਾਤਾ ਨਾਲ ਆਲੇ ਧਰਮ ਦੇ ਵਿੱਚ ਆਉਂਦੇ ਫਿਰ ਕੀ ਕਹਿੰਦੇ ਸੀ ਉਹ ਜਿਹੜੀਆਂ ਆ ਦੀ ਸੀ ਸ਼ਾਇਦ ਪਹਿਲਾਂ ਭਜਦੇ ਹੋ ਕਹਿੰਦੇ ਹੋ ਸਾਡੀ ਮਾਤਾ ਇੰਨੀ ਸਾਡੇ ਧਰਮ ਉਹਨਾਂ ਨੇ ਧਰਮੇ ਲਵੇਟ ਲੈ ਵਿੱਚ ਬਾਹਰ ਜਾ ਚਰਚਾ ਚੱਲਦੀ ਹੋਣੀ ਹੈ ਸਿੱਖਾਂ ਨਾਲ ਪਰ ਸਾਡੇ ਤਾਂ ਮਤ ਹੈ ਨਹੀਂ ਸਾਰੇ ਤਾਰੂ ਮਤ ਦੀ ਗੱਲ ਕਰਦੇ ਨੇ ਮਤ ਹੂੰ ਉਹ ਢੜੇ ਦਾ ਮਤਲਬ ਹੁੰਦਾ ਵੀ ਆ ਸਰ ਜੀ ਮਾਤਾਰ ਤਾਰਦ ਧੋ ਨਹੀਂ ਹੁੰਦੇ ਠੀਕ ਹਾਂ ਮਾਤਾਰ ਤਾਰਦ ਮਤ ਤਾਰਦ ਕਰਦੀ ਹੈ ਤਾਰਦ ਕਰਾਣੀ ਜੇ ਤਾਂ ਨੰਤਾਰਦ ਤਹਾੜ ਵੀ ਕਰਦੀ ਐ ਸੀ ਬਦਲੀ ਐ ਉਹਨਾਂ ਤਰਫ ਤੇਜਨ ਬਣਾਉਤ ਨੇ ਉਹ ਸਿੱਖ ਮੱਤ ਸਭ ਉਦਤ ਮਾਰੀ ਉਹਨੂੰ ਵੀ ਤਾਂ ਸਿੱਖ ਮੱਤ ਕਿਹਾ ਸਿੱਖ ਧਰਮ ਹੈ ਨਹੀਂ ਧਰਮ ਸੱਚਾ ਉਹ ਧਰਮ ਹੋਰ ਚੀਜ਼ ਹੈ ਬੋਲੀਏ ਸੱਚੇ ਧਰਮ ਧਰਮ ਦਾਣ ਕਰਨਾ ਧਰਮ ਪਹਿਨਣਾ ਧਰਮ ਖਾਣਾ ਨਾ ਸੱਚ ਖਾਣਾ ਸੱਚ ਪਹਿਨਣਾ ਸੱਚ ਦਿਲ ਕਰਨਾ ਉਹ ਸੱਚ ਕੇ ਹੈ ਜਿਹੜੀ ਮੱਤ ਸਾਡੀ है, ਇਹ ਨਾ ਰੋਮੀ ਬੱਤੇ ਹੈ ਗੁਰਮਤਿ ਸੱਚ ਵੀ ਕੋਈ ਸੱਚ ਸੱਚ ਦੇ ਆਵੇ ਖੋ ਜਾਂਦੇ ਬਿਜਾਰੇ ਧਰਮ ਕਹਿਣਾ ਮਤਲਬ ਇਹ ਹੈ ਸੱਚ ਦੇ ਆ ਕੇ एकता हो ਏਕਤਾ है ਜਾਂਦੀ भी ਗੁਰਮਤਿ ਵੀ ਸੱਚ ਦੇ ਆ ਜਾਂ ਕੇ ਦੂਜਿਆਂ ਨਾਲ ਜੁੜਦੀ ਹੈ ਫਿਰ ਗੁਰਮਤ ਅਜ ਵੱਖਰੀ ਲੱਗਦੀ ਹੈ ਸਾਡੀ ਮੱਤ ਉਹ ਬੱਕਰੀਆਂ ਉਹ ਹੋ ਜਾਈਓ ਇਹਦੇ ਸਾਥੇ ਜੋ ਬੱਕਰੀਆਂ ਦੇਟਾ ਉਹਨੇ ਦੇਸੀ ਬੱਕਰੇ ਹੋਗੇ ਆਇ ਤਰੀਕੇ ਨਾਲ ਬੱਕਰੀ ਜਿਹੜੇ ਦਾ ਨਾਲ ਕਰ ਕਿ ਡ੍ਰਿੜ ਕਰਦੇ ਕੇ ਸੰਗੀ ਡ੍ਰਿੜੇ ਸਭ ਉਹ ਰਾਣੇ ਜਿਹੜਾ ਡ੍ਰਿੜ ਕਰੇ ਨੀ ਸਾਰੇ ਧਰਮ ਡ੍ਰਿੜ ਕਰਾਤੇ ਮੇਰੇ ਵਿੱਚ ਜੋਗੀ ਰੁਦਾ ਤਾਲ ਇਹ ਤਾਂ ਬਾਂਦੀ ਲੋਭੀ ਹੈ ਸਾਰੇ ਲੜਗਾ ਇਹਨਾਂ ਦਾ مسلمانوں نوں بھی دل کرایا پھر مسجد دل دل کرائے قران نے ہو مسلمان نہیں بنائے جے ایو دے اصل مسلمان دے بھتے شدت تھی دل دل کراتا ਬਾਪ ਸਮਝਾਤਾ ਵੀ ਗਲਤੀ ਨਮਾਦਿ ਚ ਸੁਣੋ ਤਾਂ ਨਹੀਂ ਜਿਹੜਾ ਕਮਿਟ ਕਰਤਾ ਉਹ ਵੀ ਜਿਹੜਾ ਆਇਆ ਥੋੜੂ ਵੀ ਜਿਹੜੀ ਕਮੀ ਹੋ ਵੀ ਦੱਸਦੀ ਠੀਕ ਹੈ ਉਹ ਵੀ ਦੱਸਦੀ ਜੜੇ ਜਾਣੀ ਉਹ ਧਰਮ ਸਾਬਤ ਕਰਤੇ ਵੀ ਗੁਰਮਤ ਥੱਲੇ ਨਹੀਂ ਉਹ ਵੀ ਸਮਝਾਤੇ ਪੱਕੀ ਤਰ੍ਹਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਹਾਨੂੰ ਉਹ ਧਰਮ ਵਾਲੇ ਆਹ ਤੋਂ ਬਚ ਕੇ ਨਿਕਲ ਜਾਣਗੇ ਜਹਾਦੇ ਦੀ ਸੈਂਸ ਚਲਦੇ ਦਵਾ ਇਸਲਾਮ ਹੈ ਇਸਲਾਮ ਅਲੈਹਿ ਵਸਲਮ ਜਿੱਤ ਲੈਣਗੇ ਉਹਨਾਂ ਦਾ ਧਰਮ ਸਿਰੇੜਾ ਹੀ ਹੋਇਆ ਸਾਡੇ ਕੋਲ ਬੜਾ ਬੋਲਣ ਤੋਂ ਵਿੱਚ ਆ ਜਾਣਾ ਕਲਾਮ ਉਹਨਾਂ ਨੇ ਵੀ ਕਹਿਣਾ ਅਸੀਂ ਗੁਰਬਾਨੀ ਕਹਿ ਦੇਣੀ ਉਹ ਕਲਾਮ ਕਹਿ ਦਿੰਦੇ ਗੱਦਾ ਹੀ ਹੈ ਲੈ ਆ ਬੀ ਤੂੰ ਕਲਾਮ ਆ ਦੱਸ ਕੀ ਕਲਾਮ ਆ ਕੇ ਲਗਾਉਣਾ ਕਲਾਮ ਵਾਜੇ ਸਾਨੂੰ ਲਗਾਮ ਚਾਹੀਦੀ ਜੀ ਇਸੇ ਘੋੜੇ ਨੂੰ ਕਲਾਮ ਤੇ ਕੀ ਲਾਣਾ ਸਾਧ ਕੇ ਸਦਾ ਮਾਨ ਰੂਪੀ ਘੋੜੇ ਨੂੰ ਲਗਾਮ ਪਾਉਂਦੀ ਹੈਗਾ ਦਾ ਕਲਾਮ ਹੈ ਇਸ ਤੇ ਆਈ ਐ ਲਗਾਮ ਤੇਰੀ ਐ ਕਲਾਮ ਹਾਂ ਜੀ ਸਾਧ ਕੇ ਸੰਗੀ ਧ੍ਰਿੜੇ ਸਭ ਧਰਮ ਸਾਧ ਕੇ ਸੰਗੀ ਕੇਵਲ ਪਾਰ ਬ੍ਰਹਮ ਸਾਧ ਕੇ ਸੁਖੀ ਜੜੇ ਸਭ ਧਰਮ ਬਸ ਕੇ ਸੰਗੀ ਕੇਵਲ ਪਾਰ ਰਹੂ ਹਾਂ ਸਾਦ ਜਦ ਸੰਗੀ ਖਾ ਜਾਂਦਾ ਹੈ ਉਸ ਵੇਲੇ ਕੇਵਲ ਪਾਰ ਬਰਬਰ ਰਹਿ ਜਾਂਦਾ ਹੋਰ ਕੋਈ ਧਰਮ ਦੀ ਵਿਰੋਧ ਨਹੀਂ ਰਹਿੰਦੀ ਧਰਮਾਂ ਦੀ ਜਿਹੜੀਆਂ ਬਨਾਉਤਾਂ ਨੇ ਉਹਦੇ ਰਿਆਦ ਦੀ ਪਾਰ ਬਰਬਰ ਬਿਕਰਿਆ ਉਹਨਾਂ ਦਾ ਕਿਸੇ ਫਤ ਧਰਮਾਂ ਦੀਆਂ ਬਾਕੀ ਬਨਾਉਤਾਂ ਸਭ ਖਤਮ ਪਾਰ ਬਰਬਰ ਦੇ ਸਭ ਪਾਰਵਰਮ ਤੇ ਸਭ ਥਰਲੇ ਜਿਹੜਾ ਧਰਮ ਪਾਰਵਰਮ ਤਕਦੀ ਲੈ ਕੇ ਜਾਂਦਾ ਜਿਹੜਾ ਪਾਰਵਰਮ ਦੇ ਨਾਲ ਨਹੀਂ ਮਲਾਉਂਦਾ ਪਾਰਵਰਮ ਬਾਰੇ ਨਹੀਂ ਸਮਝਦਾ ਦਰਸ਼ੁਤ ਰਹਨਾ ਪਾਰਵਰਮ ਦਾ ਉਹ ਧਰਮ ਦਾ ਰੋਣੀ ਹੈ ਛੋਟਾ ਕੁਝ ਕਵੀ ਬਸ ਹੋਰ ਨਹੀਂ ਸਾਧ ٹیبل پارم رہ جاتا ہے ٹیبل پارم بھی بنا دی ہے اور کیا سادہ ہے کیا سادہ ہے ماں اے دا مطلب ہے باقی دیو بتانے ہونا جو کوئی بھی بات مانتے سادگی گل نہیں کر رہی ایتھے کبیر کہنا کون بڑی جو بند کو مارا ہے ایک بڑی دسو میں جینے من ماریا ہوے نیتو ساکے جڈیاں وچ اڑے کسی بڈی دیڑی ਆ ਜਿਹੜੀਆਂ ਸਾਡੇ ਕੋਲ ਨੇ ਉਹ ਬੇਦਾਲੀ ਮਸਤਾ ਬਣਾਈ ਹੋਈ ਆ ਪਰਮੇਸ਼ਰ ਦੀ ਉਹ ਜਿਹੜੀਆਂ ਦੁਨੀਆਂ ਬਣਨ ਦੇ ਪਹਿਲਲ ਉਹ ઋਸ਼ੀਆਂ ਮੁੜੀਆਂ ਦੀਆਂ ਉਹ ਤਾਂ ਮਨਵਾਲ ਦੀ ਫੇਰ ਗੱਲੇ ਹੀ ਕਰਦੇ ਜੋ ਜੋ ਕਰਦੇ ਨੇ ਕਿਤੇ ਕਿਤੇ ਮਨ ਮਾਰਨ ਕਾਰਨ ਬਣ ਜਾਈ ਕਹਿੰਦੇ ਜੇ ਮਨ ਮਾਰਨ ਵਾਸਤੇ ਜੇ ਜਗਲ ਜਾਣੇ ਹੋ ਜਿੱਦਾਂ ਤੇ ਬਿਨਾ ਇਹ ਮਨ ਮਾਰਨ ਬਾਅਦ ਜਿਹੜਾ ਜਲ ਹੈ ਉਹਦੀ ਲੋੜ ਹੈ ਉਹ ਜਲ ਉਹ ਵਰਤ ਜਲ ਉਹ ਕਿਤੇ ਉਹ ਤਾਂ ਇੱਥੇ ਵੀ ਮਿਲ ਸਕਦਾ ਥਾ ਤੁਹਾਡੇ ਅੰਦਰ ભગવાન ਤੇ ਨਾ ਨਹੀਂ ਹੁੰਦਾ ਸਾਹਿਬ ਭਗਵਾਨ ਸਾਧਰ ਬਾੜ ਤੋਂ ਤੇ ਨਹੀਂ ਕਰਦਾ ਹਾਂ ਸਾਧਕੇ ਸੰਗੇ ਨਾਮ ਸਾਧਕੇ ਸੁਣੀ ਪਾਇ ਨਾਮ ਨਾਲ ਆਪਣਾ ਮਨ ਸਾਧਕੇ ਨਾਮ ਨਾਲ ਲਾ ਪਾਲਕ ਨੂੰ ਨਾਨਕ ਸਾਧੂ ਕੇ ਕਰਨਾ ਹਾਂ ਨਾਨਕ ਇਹਨਾਂ ਸਾਧੂ ਕੇ ਕਰਵਾ ਸਾਧੂ ਕਾ ਕੁਰਬਾਨ ਕਿਉਂ ਸੁਧ ਨਾਮ ਨਾਲ ਅਨ ਪਾਲਿਆ ਉਹ ਮਨ ਸਾਧ ਲਿਆ ਜੇ ਨਾ ਮਨ ਸਾਧ ਲਿਆ ਸਾਧੂ ਹੈ ਸਾਧੂ ਸਾਧੂ ਰਹੇ ਬੜਾ ਆਪਣਾ ਕਿਵੇਂ ਸਾਧਿਆ ਇਹ ਸਾਨੂੰ ਕਬੂਦਸ ਦੱਸਦਾ ਦਤਾ ਚਲ 10 ਪੈਸੇ ਕਰਤੇ ਅਸੀਂ ਕੁਰਬਾਨ ਜਾਂਦੇ ਉਹ ਦਵਾਈ ਨੇ ਸਾਡੂ ਲੈ ਕੇ ਤਾਂ ਦੱਸਿਆ ਭਾਈ ਆ ਇਹ ਨੂੰ ਵਰਤ ਲਿਓ ਜੇ ਨਾ ਦੱਸਦਾ ਬਲਾਂ ਆਪਣਾ ਨੌਰਾ ਹੋ ਗਿਆ ਸੀ ਕਬ ਨਾ ਦੱਸ ਕੇ ਜਾਂਦਾ ਫਿਰ ਅਸੀਂ ਕੀ ਕਰਦੇ ਕਿਉਂਕਿ ਉਹ ਦੱਸ ਗਿਆ ਫ੍ਰੀਜ ਉਹਨਾਂwidehat ਕਿੱਡੀ ਉਫੀ ਮਿਲੀ ਇਹ ਐਸਾ ਕਰਕੇ ਅਸੀਂ ਕੁਰਬਾਨ ਹੋਏ ਕਹੇ ਇਹ ਕਹਿਣਾ ਇਹ ਸਾਨੂੰ ਰੈਡੀਮੈਡ ਚੀਜ਼ ਮਿਲ ਗਈ ਪੰਜਵੇਂ ਬਾਦਸ਼ਾਹ ਕਹਿੰਦੇ ਕੁਰਬਾਨ ਤੋਂ ਬੜੀ ਹੈ ਸਭ ਤੋਂ ਬਾਦਸ਼ਾਹ ਉਸ ਜਿਹਨੇ ਆਪਣਾ ਮਨ ਪਹਿਲਾਂ ਸਾਧਿਆ ਦੁਇਆ ਤਾਂ ਸੰਗਤ ਕਰਕੇ ਸਾਧਿਆ ਸਾਰਿਆਂ ਨੇ ਫਿਰ ਤਾਂ ਸੰਗਤ ਕਰਕੇ ਸਾਧਿਆ ਲੋ पैसा स्पोर्ट हो, हो गया ये करके साधु तो करवान इन्हें अपना माने आप सादे दा सारे नहीं अपना पर किसी नु स्पोर्ट भी मिल जाती है जमे कोई पहले अमीर का बच्चा पैदा होया शाणा भी सी वो कोड़सी आया ओदे ना हो गया ਇੱਕ ਪਾਈ ਕੋਲ ਜੀ ਕੋ ਆਪਣੀ ਗੁੱਤੀ ਨਾਲੇ ਵਿੱਚ ਕਰਕੇ ਬਹੁਤ ਆ ਘਰ ਦੇ ਵਿੱਚ ਬਾਪ ਹੈ ਜਿਹੜਾ ਉਹ ਧਫੜਵਰੀਏ ਉਹਨਾਂ ਖਲਾਫ ਹਸੇ ਤੇ ਕੋਈ ਵੀ ਸਾਥ ਨਹੀਂ ਦੇ ਰਿਹਾ ਕਰਦਾ ਕੋੜ ਕੋਈ ਨਹੀਂ ਇੰਨੇ ਬਫਰੋਧ ਦੇ باوجود ਇਹ ਰਸਤਾ ਬਣਾ ਕੇ ਰੱਖਿਆ ਕੱਲ ਛੋਟੀ ਨਹੀਂ ਹੈ ਹਾਂ ਆਪ आप अपन ये गादी देख लो फिर क्या आप का भी पबे ऐसा फैसला कौन लेगा डिस्ट्रिक्ट का लेगा सरकार के तो इन्हें ठीक मत दिया संसाधन भी तो कुछ बढ़े गए और थाने बताया है देना भक्त ने तुम जी बरकत खाने संग This <laughs> is...